ਸਿਰਿ ਰਾਗ ਬਾਣੀ ਫਗਤ ਦੇਣੀ ਜਿਉ ਕਾਰ ਸਤਿਗੁਰ ਪ੍ਰਸਾਦ ਦਾ ਮਤੁਰਕ ਕੀ ਹੈ ਸਵਾਲ ਤਾਂ ਇਹ ਜੋ ਇਹ ਕਿਉਂ ਕਾਰ ਹੈ ਉਹਦੇ ਬਾਰੇ ਜੋ ਬੀ ਸਤਗੁਰ ਨੇ ਗਿਆਨ ਦਿੱਤਾ ਹੈ ਸਤਿਗੁਰ ਨੇ ਪ੍ਰਸਾਦ ਦਾ ਉਹਦੀ ਵਿਆਖਿਆ ਕੀਤੀ ਹੈ ਸ਼ਬਦ ਸਤਿਗੁਰ ਨੇ ਜੋ ਵਿਆਖਿਆ ਕੀਤੀ ਹੈ ਕਤਬ ਨੂੰ ਗਿਆਨ ਵਖਿਆ ਹੈ ਕਿ ਕਿਉਂ ਦਾ ਉਹਦੀ ਵਿਆਖਿਆ ਸ਼ਬਦ ਸਵਰਨਾ ਸੰਬੰਧ ਉਹਦਾ ਰਾਗ ਕੋਈ ਹੋਵੇ ਰਾਗ ਦਾ ਇਹਨਾਂ ਨੂੰ ਰਾਗ ਬਖਰੀ ਗੱਲ ਦਾ ਸਿਰੀ ਰਾਗ ਬਾਣੀ ਭਗਤ ਦੇਣੀ ਜਿਓ ਕੀ ਪਹਿਰਿਆਂ ਕੈ ਘਰ ਗਾਵਣਾ ਆ ਦੇਖੋ ਉਹ ਸਾਨੂੰ ਦੱਸਿਆ ਤੂੰ ਹੀ ਗਾਉਣ ਕਿਵੇਂ ਕਿ ਜਿਹੜੇ ਬਾਜੇ ਨਾਲ ਗਾਉਂਦੇ ਕੀਰਤਨ ਤਾਂ ਹੈ ਦੀ ਕੀਰਤਨ ਦਾ ਮਤਲਬ ਗਾਉਣਾ ਗਾਵਣਾ ਕਹਿ ਕੀਰਤਨ ਕਰਾਂ ਨਹੀਂ ਕਿਹਾ ਦੇਖੋ ਕੀਰਤਨ ਕਹਿ ਗਾਉਣਾ ਕਹਿ ਗਾਉਣਾ ਗਾਵਨ ਤੋਰ ਨੂੰ ਪਉਣ ਪਾਣੀ ਵੈਸੰਤਰ ਗਾਵਨ ਇਹਨਾਂ ਨੇ ਗਾਵਨ ਨੂੰ ਕੀਰਤਨ ਬਣਾ ਲਿਆ ਆ ਗੋਣੇ ਕੋਣ ਗਿਆਨ ਵੀ ਹੋਣੇ ਗਾਵਨ ਗੀਤ ਜੋ ਗਾ ਰਹੇ ਨੇ ਉਹਦਾ ਗਿਆਨ ਹੈ ਨਹੀਂ ਰੱਜਿਆਂ ਨੂੰ ਗਾ ਰਹੇ ਨੇ ਉਹਨਾਂ ਨੂੰ ਵਰਵਾਲੀ ਕਹਿੰਦੇ ਗਿਆਨ ਵੀ ਹੋਣਾ ਗਾਵਨ ਗੀਤ ਗੀਤ ਦੇ ਤੌਰ ਤੇ ਗਾ ਰਹੇ ਨੇ ਗਿਆਨ ਨਾਮ ਦੇ ਨਾਲ ਤੇ ਜਿੱਕੇ ਦੀ ਗਾ ਰਹੇ ਨਾਮ ਰਸ ਨਹੀਂ ਦੇ ਰਹੇ ਲੋਕਾਂ ਨੂੰ रादरफ दे रेड न्यू ज्ञान वे होना गावन गीत भुखे मुल्ला करे मुसीत भुखे मुल्ला मांगू करदे ने ए कौन वाले रागी जी गाण दी इंपोर्टेंस नहीं है तब पहरियां का घर गावना ए क्यों लिखया जी गावन दे बॉर्डर है ਇਹ ਕੀਰਤਨ ਕਰਨ ਜਿਵੇਂ ਜਿਵੇਂ ਅੱਜ ਕੱਲ ਨਹੀਂ ਕੀਰਤਨ ਤਾਂ ਉਹ ਲਿਖਿਆ ਹੈ ਕੀਰਤੀ ਹੈ ਕੀਰਤੀ ਹੋ ਚੀਜ਼ ਹੈ ਕੀਰਤੀ ਬਾਜਣਾ ਨਹੀਂ ਹੁੰਦੀ ਕੀਰਤੀ ਵੈਸੇ ਹੈ ਜਸ ਕਰਨਾ ਜਸ ਗਾਉਣ ਵਾਲੀ ਬੁੱਤ ਰੋਬ ਗਾਉਣ ਦੇ ਵਿੱਚ ਵੀ ਸਹੀ ਤੁਦ ਨੂੰ ਜੋ ਤੁਦ ਭਾਉਣ ਤੇ ਕਈ ਗਾਉਣਾ ਉਹਨਾਂ ਦਾ ਹੀ ਦਰਗਾਹ ਚ ਕਬੂਲ ਹੈ ਜਿਹੜੇ ਨਾਮ ਰਸ ਭਿੱਜ ਕੇ ਗਾਉਂਦੇ ਨੇ ਉਹ ਕਬੂਗੁਰਾ ਵਾਕੀ ਕਬੂਲ ਭੁਖੇ ਬੁੱਲਾ ਕਰੇ ਵਜ਼ੀਰ ਹੈ ਉੱਥੇ ਵੀ ਗਾਵਣਾ ਸਹੀ ਤੁਦ ਨੂੰ ਗਾਵਣ ਜੋ ਤੁਦ ਭਾਵਨ ਨਹੀਂ ਹੋਇਆ ਜੀ ਕੋਈ ਕੌਂਦੇ ਜਿਹੜੇ ਤੈਨੂੰ ਕਬੂਲ ਦੇ ਦਰਗਾਹ ਚ ਕਬੂਲ ਨੇ ਜਿਹੜੇ ਤੇਰੇ ਨਾਲ ਜੁੜ ਕੇ ਗਾਉਂਦੇ ਨੇ ਜਿਹੜੇ ਰਾਗ ਨਾਲ ਜੁੜ ਕੇ ਗਾਉਂਦੇ ਨੇ ਬਾਜੇ ਨਾਲ ਸੁਰਾ ਨਾਲ ਟਪਦੇ ਨਾਲ ਜੁੜ ਕੇ ਗਾਉਂਦੇ ਨੇ ਜਿਹੜੇ ਸੰਗਤਾਂ ਨਾਲ ਜੁੜ ਕੇ ਗਾਉਂਦੇ ਨੇ ਉਹ ਤੇਰੇ ਨਾਲ ਜੁੜ ਕੇ ਨਹੀਂ ਗਾਉਂਦੇ ਉਹ ਪੈਸਿਆਂ ਵਾਸਤੇ ਗਾਉਂਦੇ ਨੇ ਉਹ ਘੜੀ ਦੇਖਦੇ ਨੇ ਟਾਈਮ ਕੰਨਾ ਹੋ ਗਿਆ ਉਹ ਪੈਸਿਆਂ ਨੂੰ ਗਾਉਂਦੇ ਨੇ ਆਪਣੀ ਹੋਂਦ ਤੇ ਪਛੇਤਾ ਨੂੰ ਗਾਉਂਦੇ ਸੀ ਅਸੀਂ ਵੱਡੇ ਰਾਗੀ ਪਰਵਾਪੂਰਨ ਲੋਕਾਂ ਤੇ ਰਾਗ ਦਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਰੇ ਨਰ गर्भ कुंडल जब आछत हां उर्द ध्यान लिव लागा जीव नु जब तू गर्भ कुंडल ਦੇ ਵਿੱਚ गर्भ थी तेरा त्यान उर्द सी तप करदा सी पर ध्यान तेरा शरीर बनावण ਵਿੱਚ ਲੱਗਿਆ ਹੋਇਆ ਸੀ माया ਦਾ ਧਿਆਨ ਸੀ उर्द ध्यान ਲੇਵ ਲੱਗੀਆਂ ਸੀ ਹੋਰ ਲੇਵ ਨਾਲ ਕੰਮ ਕਰਦਾ ਸੀਗਾ ਜ਼ਰੂਰ ਪਰ ਕਰਦਾ ਸੀ ਮਾਇਆ ਦਾ ਮਾਇਆ ਦੀ ਕੋਜੀ ਖੋਜ ਕਰਦਾ ਕੋਈ ਦੂਜੀ ਚੀਜ਼ ਬਣਉਂਦਾ ਹੋਰ ਤੇ ਘਟਦਾ ਤੁਹਾਡਾ ਵਾਲਾ ਬੋਧਿਕਾਰ ਸੁਧਾਰਾ ਘਟਦਾ ਪੂਰੀ ਲੇਵ ਹੁੰਦੀ ਆ ਨਾ ਤੇ ਹੋਰ ਸੀ ਜਿਵੇਂ ਸਾਡੇ ਦੀ ਲੇਵ ਹੁੰਦੀ ਆ ਉਰਦੋ ਧਿਆਨ ਹੈ ਮਾਇਆ ਧਿਆਨ ਆਤਮ ਤੇ ਆਦੀ ਨਹੀਂ ਹੈ ਆਤਮ ਤੇ ਅਨੁਭੋਤੀ ਚ ਬਾਹਿਆ ਦਾ ਵਿੱਚ ਧਿਆਨ ਨਾਲ ਕੋਈ ਕੰਮ ਕਰਨਾ ਹੋਰ ਚੀਜ਼ ਹੈ ਉਰਦੋ ਧਿਆਨ ਨਿਬਣਾ ਉਰਦੋ ਧਿਆਨ ਹੈ ਬਾਹਰ ਮੁਖੀ ਧਿਆਨ ਹੈ ਅੰਦਰ ਮੁਖੀ ਧਿਆਨ ਨਹੀਂ ਹੈ ਉਹਦਾ ਮਤਲਬ ਇਹ ਹੈ ਫਬਜੀ ਇਥੇ ਰੇ ਨਰ ਗਰਭ ਕੁੰਡਲ ਜਬ ਆਛਤ ਪਹਿਲਾ ਸਰੀਰ ਬਣਨਾ ਸ਼ੁਰੂ ਹੁੰਦਾ ਹੈ ਜਾਂ ਆਤਮਾ ਉਥੇ ਆਂਦੀ ਹੈ ਜੀ ਆਨ੍ਹਾ ਦਾਤ ਸਰੀਰ ਘੜ ਬਣਦਾ ਬਣਦਾ ਕੋ ਆਤਮਾ ਬਿਨਾਂ ਸਿਰ ਬਣਦਾ ਹੀ ਠਾਤੂ ਦੇ ਚ ਜੋਤ ਜੇ ਵਿੱਚ ਰਰੂ ਟਟ ਘੜ ਜੋਤ ਸੁਮੋਏ ਜੇ ਚੀਜ਼ ਸੁਮੋਣੀ ਹੋ ਤਾਂ ਹੈ ਦੀ ਬਣੂ ਕਦ ਬਾਕੀ ਕੀ ਚਾਹਾਂਗਾ ਸਾਰਿਆਂ ਦਾ ਪਹਿਲਾਂ ਹੀ ਦੇ ਜੋਤ ਨਹੀਂ ਹੈ ਤੇ ਜੋਤ ਉਹ ਤਾਂ ਨਹੀਂ ਬਣੂ ਨਹੀਂ ਬਣ ਕੇ ਮੈਂ ਜਾਊ ਤੇ ਤਾਂ ਬਿਨਾਂ ਜੋਤ ਤੇ ਬਣ ਜਵੇ ਅਸਰ ਗ੍ਰਹਿ ਹਮ ਬਹੁਤ ਬਸਾਏ ਜਬ ਹਮ ਰਾਮ ਗਰਬ ਹੋਏ ਆਏ ਬਸੌਣ ਵਾਲਾ ਹੀ ਨੀ ਉਥੇ ਖੈ ਪਰੌਣ ਵਾਲਾ ਹੀ ਨਹੀਂ ਗੜੇ ਉਸ ਗੜ ਮੈਂ ਜਿਹਨੇ ਬਣਾਇਆ ਸੀ ਗੜ ਉਹ ਮਿਲਿਆ ਤੇ ਕਿਹਾ ਵੀ ਇਹਨੇ ਆਪਣਾ ਉਰਦ ਧਿਆਨ ਉਹ ਮਾਇਆ ਧਿਆਨ ਲੋਟਿਆ ਦਦਾ ਉਸ ਦੂਲਤੇ ਪਾਸੇ ਬਾਹਰ ਮੁਖੀ ਬਾਹਰ ਮੁਖੀ ਤੇ ਹਨ ਮਹਾਰਾਜ ਬਾਇਆ ਦਾ ਕਰ ਬਣਾਉਣਾ ਮਾਇਆ ਦਾ ਬਾਇਆ ਕਿਰਨ ਹੋਗਾ ਜਿਹੜੀ ਕੀ ਬਣਾ ਰਿਹਾ ਉਹ ਧਿਆਨ ਜੋ ਆਤਮ ਨਿਰਮਾਣ ਨਹੀਂ ਕਰ ਰਿਹਾ ਬੁੱਧੀ ਦਾ ਵਿਕਾਸ ਨਹੀਂ ਹੋ ਰਿਹਾ ਉੱਥੇ ਜਦ ਬੁੱਧੀ ਦਾ ਵਿਕਾਸ ਹੁੰਦਾ ਗਿਆਨ ਦਾ ਪ੍ਰਗਾਸ ਵੱਧਦਾ ਹੈ ਅੰਦਰ ਫੇਰ ਆਤਮ ਧਿਆਨ ਹੁੰਦਾ ਸਰੀਰ ਬਣੇ ਤੋਂ ਬਾਅਦ ਉਹ ਖਤੂ ਨਾ ਜਿਹੜਾ ਅੰਦਰ ਧਿਆਨ ਹੋਣਾ ਹਾਲ ਤਾਂ ਸਰੀਰ ਬਣਾ ਲਿਆ ਛੇ ਤੋਂ ਬਣਾ ਆਤਮ ਤੇ ਦੀ ਹੋਈ ਨਹੀਂ ਸਕਦਾ ਅਨ ਸ਼ਬਦ ਸੁਨੇਹ ਦਿੱਤਾ ਸਕਦਾ ਸ਼ਬਦ ਤੇ ਬਿਨਾ ਅਤਿਆ ਨਹੀਂ ਹੁੰਦਾ ਆਤਮ ਤੇ ਦੀ ਨਹੀਂ ਹੁੰਦਾ ਚਲੋ ਕਹਾਣੀ ਗੱਲਾਂ ਨੇ ਲੋਕਾਂ ਨੂੰ ਸ਼ਨਾ ਸਮਝਣਾ ਇਹ ਗੱਲ ਹੁੰਦੀ ਹਾਲੇ ਜਿਤਕ ਪਿੰਡ ਆਇਆ ਮਰਦ ਪਿੰਡਾ ਉਦੋਂ ਥਾ ਹੀ ਨਹੀਂ ਪਤਾ ਬਣਾਉਣਾ ਸੀ ਇਹ ਜੋ ਇਹਦਾ ਜਿਹੜਾ ਅੱਜ ਹੰਕਾਰ ਹੈ ਸਰੀਰ ਦਾ ਉਦੋਂ ਹੰਕਾਰ ਹੈ ਨਹੀਂ ਸੀਗਾ ਉਦੋਂ ਤਾਂ ਇਹ ਬਣਾਉਣਾ ਸੀ ਬਡੂਕ ਨਹੀਂ ਬਣੂ ਕਹਾ ਲੈ ਕੇ ਬਾਹਰ ਨਿਕਲੂ ਕਦੀ ਨਿਕਲੂ ਤਾਂ ਪਤਾ ਹੀ ਨਹੀਂ ਸੀ ਉਦੋਂ ਵਰ ਵਿਚ ਨਹੀਂ ਮਰ ਜਾਂਦੇ ਬੱਚੇ ਜਲੂ ਵੇਲੇ ਮਰ ਜਾਂਦੇ ਨੇ ਉਦੋਂ ਇਹਦਾ ਹੰਕਾਰ ਨਹੀਂ ਸੀ ਉਦੋਂ ਭੈ ਸੀ ਦਰਸੀ ਉਦੋਂ ਉਹ ਕਾਤਾ ਹੋਣਾ ਉਦੋਂ दांत ਬੜੀ ਹੋਤੀ ਸੀ ਹੁਣ ਦਾਤ ਪਿਆਰੀ ਬਿਸਰੇ ਦਾਤਾਂ ਦਾਤਾਰ ਬਿਸਰ ਗਿਆ ਸਰੀਰ ਨਾ ਤਰ ਹੋ ਗਿਆ ਇਹਦਾ ਘਾਰ ਹੋ ਗਿਆ दांत ਪਿਆਰੀ ਹੋ ਗਈ ਦਾਤਾਰ ਬਿਸਰ ਗਿਆ ਉਦੋਂ ਦਾਤਾਰ ਨਾਲ ਜੁੜਿਆ ਹੋਇਆ ਸੀ ਉਦੋਂ ਕਰਪਾ ਗਾ ਤਾਂ ਤੇਰੀ ਕਿਰਪਾ ਨਾਲ ਕੁਝ ਹੋਊਗਾ ਇਹਦੀ ਤਾਂ ਗੱਲ ਸੀ ਪਰ ਸਰੀਰ ਦਾ ਹੱਕਾ ਨਹੀਂ ਸੀ ਆ ਜਿਹੜਾ ਤਾਪ ਐਨੀ ਜਿਵੇਂ ਤੂੰ ਕਿਰਪਾ ਕਰ ਮੇਰਾ ਕੰਮ ਹੋ ਜਵੇ ਇਹ ਤਾਪ ਵਾਲੇ ਵੀ ਆਪਣਾ ਸਾਰੀ ਕੱਬ ਬਾਤ ਨੇ ਇਹਨੂੰ ਤਾਪ ਕਹਿੰਦੇ ਸੰਸਾਰੀ ਪ੍ਰਾਪਤੀ ਕਿਸੇ ਵਸਤੂ ਦੀ ਹੋਵੇ ਸਰੀਰ ਸਭ ਚੀਜ਼ ਐ ਇਹਦੀ ਪ੍ਰਾਪਤੀ ਬਾਤ ਜਿਹੜੀ ਲੈ ਲੱਗੀ ਉਹ ਉਦੋਂ ਕਹਿੰਦੇ ਨੇ ਇਹਨੂੰ ਦੀ ਪ੍ਰਾਪਤੀ ਦੀ ਗੱਲ ਐ ਉੱਥੇ ਨਾਮ ਦੀ ਪ੍ਰਾਪਤੀ ਦੀ ਗੱਲ ਨਹੀਂ ਆ ਉੱਥੇ ਗਰਵ ਦੀ ਅਵਸਥਾ ਦੀ ਗੱਲ ਆਇਆ ਕਰਤੀ ਤੀ ਲੋਕੀ ਬਾਤ ਐ ਇਹ ਦੂਜੇ ਲੋਕ ਦੀ ਗੱਲ ਕਹੀ ਹੁਣ ਸੀ ਡਿਮਾਂਡ ਕੀਤੀ ਸੀ ਸੋਚੀ ਸੀ ਕਰਦਾ ਕੀ ਸੀ ਤਪਤਾ ਸੀਗਾ ਇਹ ਉਹ ਤਪ ਨੂੰ ਪੋਜ਼ਿਟਿਵ ਮੰਨਦੇ ਨੇ ਪੋਜ਼ਿਟਿਵ ਨਹੀਂ ਸੀ ਤਪ ਉਹ ਤਪ ਕਦੇ ਪੋਜ਼ਿਟਿਵ ਹੁੰਦਾ ਹੀ ਨਹੀਂ ਜੇ ਨਾ ਤਪਾ ਪੋਜ਼ਿਟਿਵ ਨਹੀਂ ਹੁੰਦਾ ਉਹ ਮਾਇਆ ਵਾਸਤਵ ਦਾ ਅਗਦ ਵਾਸਤਵ ਦਾ। ਕਾਇ ਤੋਂ ਨਾ ਜਾਂਦਾ ਦਾ ਬੜੇ। ਮਰਤਕ ਪਿੰਡ ਪਦ ਮਦ। ਨਾ ਇਹ ਨਹੀਂ। ਇਹ ਮਰਤਕ ਪਿੰਡ ਹੈ ਸਰੀਰ ਹੈ ਇਹਦਾ ਜਿਹੜੀ ਪਦਵੀ ਹੈ ਪਦਵੀ ਹੈ ਨਹੀਂ। ਕੀ ਪਦਵੀ ਹੈ? ਬੇਰ ਸਰੀਰ ਹੈ। ਤੋਂ ਤੋਂ ਕੀ ਪਦਵੀ ਦਾ ਸਰੀਰ ਹੈ? ਚਰਸੀ ਲੱਖ ਜੌਂਡ ਤੋਂ ਬੜਾ ਬਟਿਆਈ ਹੈ। ਇਹਦਾ ਮਰਤਕ ਫੰਡਾ ਇਹਦਾ ਤਾਂ ਇਹ ਵੀ ਮੇਰੇ ਕੋਲ ਦੇਖੋ ਬਣਖਾ ਸ਼ਰੀਰ ਹੈ ਜਿਹੜਾ ਹੁਣ ਕਾਰਾ ਅਜਿਹਾ ਸਿਰ ਲਖ ਜੂਤ ਦਾ ਬਾਦਸ਼ਾਹ ਉਹਦੋਂ ਕਾਰ ਨਹੀਂ ਸੀ ਆਪਣਾ ਹੁਕਮ ਹੈ ਆਪਣਾ ਨਸ਼ਾ ਉਹਦਾ ਸ਼ਰੀਰ ਦਾ ਉਦੋਂ ਨਸ਼ਾ ਨਹੀਂ ਸੀ ਜਿਹੜੀ ਉਹ ਹੈ ਹੀ ਨਹੀਂ ਸੀ ਕੋਲ ਉਹਦੋਂ ਬਣਾ ਰਿਹਾ ਸੀ ਆਹ ਉਪਨਾਕੇ ਬਾਹਰ ਪਤਾ ਨਹੀਂ ਆਉ ਪਤਾ ਨਹੀਂ ਆਉ ਜਦੋਂ ਉਹ ਬਾਹਰ ਨਿਕਲਿਆ ਨਾ ਫਿਰ ਦੁਨੀ ਚਿਤਲਾਇ ਖਸਮ ਤੋਂ ਸਾਥ ਦੁਨੀ ਚਿਤਲਾਇ ਖਸਮ ਬਸਰੇ ਖਸਮ ਬਾਹਰ ਨਿਕਲੇ ਜਦ ਵਿੱਚੋਂ ਗਰਬੇ ਦੁਨੀ ਚਿਤਲਾਇ ਸ਼ਰੀਰ ਨਾ ਚਿਤਲਾ ਲਿਆ ਜੀਨ ਜਵਾਇਆ ਦੁਨੀ ਸੇ ਹੂੰ ਜੀਨ ਗਵਾਲਿਆ ਦੁਨੀ ਨਾ ਸ਼ਰੀਰ ਕਰਕੇ ਜੀਨ ਜਵਾਇਆ ਨੇ मृतक पिंड पद मद न अहنس नहीं से इसे कढ़ी भी ओदा नहीं सी अहنس दनात अज्ञान सुनागो एक अज्ञान सुनागा अज्ञानता सी चाहे ओ नहीं सी और ओथे लेव लगी हुई सी ਗਿਆਨ ਦਾਦਾ ਸੀ ਸਰੀਰ ਬਣਾਉਣ ਦਾ ਗਿਆਨ ਸੀ ਜਿਹਨਾਂ ਖੋਜੀ ਹੈ ਉਹਨੇ ਜੋ ਮੰਗਿਆ ਠਾਕੁਰ ਆਪਣੇ ਕੋਲ ਜੋਈ-ਸੋਈ ਦੇਵੇ ਉੱਥੇ ਮੰਗਦਾ ਸੀ ਸਰੀਰ ਬਣਾਉਣ ਦੀ ਕਲਾ ਉਹ ਵੀ ਦਿੱਤੀ ਅ ਹੈ ਉਹ ਗਿਆਨ ਨਹੀਂ ਸੀ ਕੋਈ ਸੁਣਦਾ ਸੀ ਅ ਸੀ ਉਹ ਬਾਹਿਆ ਦਾ ਗਿਆਨ ਅ ਹੀ ਹੁੰਦੀ ਹੈ ਮੂਲ ਤੇ ਵਿੜਾਦੇ ਆ ਸੀ ਸੱਚੀ ਝੂਠੀ ਨਹੀਂ ਸੀ ਬਣਾ ਰਿਆ ਸੱਚੀ ਮੂਲ ਤੋਂ ਬਣਾ ਰਿਆ ਸੀ ਉੱਥੇ ਚਾਹੇ ਪਰ ਅਗਿਆਨਤਾ ਹੀ ਸੀ ਉਹਨੂੰ ਗਿਆਨ ਮੈਂ ਉਹ ਬੁੱਧੀ ਦੇ ਵਾਰ ਫਿਰ ਨਹੀਂ ਕਹ ਸ਼ਰੀਰ ਦੀ ਮੂਲਤੀ ਬਣਾ ਰਿਆ ਸੀ ਬੁੱਧੀ ਵਾਸਤੇ ਇੱਕ ਅਗਿਆਨ ਸੁਨਾਗਾ ਇੱਕੋ ਜਗ੍ਹਾ ਤੇ ਹੁੰਦਾ ਇੱਕੋ ਗਿਆਨ ਹੁੰਦਾ ਸੀ ਇੱਕ ਅਗਿਆਨ ਅਗਿਆਨ ਇਟ ਕੌਜ਼ ਹੀ ਗਿਆਨ ਨਹੀਂ ਸੀ ਉਹ ਮਾਇਆ ਦਾ ਗਿਆਨ ਹੋ ਗਿਆ ਕਰਨ ਦੇ ਸੁਨਾਗਾ ਸੁਣਦੇ ਆਸੀਂ ਨਾਗਾ ਦਾ ਅਰਥ ਕੀ ਆ ਉਹਨੂੰ ਮਨ ਦੇ ਵਿੱਚ ਦੁਹਰਾਉਣਾ ਕੋਣਾ ਹੁੰਦਾ ਹੈ ਅੰਦਰ ਅੰਦਰ ਉਹਨੂੰ ਉਦੋਂ ਤੇ ਆ ਬਿਲਕੁਲ ਨਾ ਕੋਣਾ ਹੁੰਦਾ ਜਿਹੜਾ ਸੁਣਦੇ ਆ ਉਹ ਗਾ ਵੀ ਰਹੇ ਆ ਬਿਨਾ ਤੇ ਕਹਿੰਦਾ ਸੀ ਉਹ ਦੇ ਉਹਨਾਂ ਨੇ ਜਿਹਦਾ ਸੁਣਦਾ ਵੀ ਨਹੀਂ ਸੀ ਉਹਦੇ ਨਾਲ ਜੁੜਿਆ ਹੋਇਆ ਸੀ ਲਗਾਤਾਰ ਧਿਆਨ ਜੁੜਿਆ ਹੋਇਆ ਸੀ ਉਹਦੇ 'ਚ ਬਸ ਇਹੀ ਕਹੋ ਬਸ ਇਹਦੋ ਜਿਹਾ ਨਹੀਂ ਲਾਗਾ ਲਫ਼ਜ਼ ਹੈ ਨਾ ਜੀ ਉਹ ਕਾਫੀ ਅਮਰੋੜ ਵਾਸਤੇ ਲਫ਼ਜ਼ ਆਇਆ ਹੈ ਨਾਗਾ ਇਹਨਾਂ ਨੇ ਇੱਥੇ ਬਈ ਅਰਥ ਕਿਤੇ ਆ ਦਿਨੇ ਰਾਤੀ ਇੱਕ ਹਰੀਦ ਦਾ ਧਿਆਨ ਸੀ ਤੇ ਅਗਿਆਨ ਦਾ ਅਭਾਵ ਸੀ ਅ ਦਾ ਭਾਵ ਸੀ ਅ ਹੀ ਸੀ ਉਹ ਇਹ ਜੇ ਉੱਥੇ ਦਾ ਅਭਾਵ ਸੀ ਫਿਰ ਉਹ ਮੁਕਤ ਹੋ ਜਾਂਦਾ ਫਿਰ ਤਾਂ ਜੇ ਬੱਚਾ ਗਰਭ ਚੇ ਉੱਥੇ ਮੁਕਤ ਹੋ ਜਾਂਦਾ ਸਰੀਰ ਛੱਡ ਦੇਵੇ ਫਿਰ ਤਾਂ ਇਹਨਾਂ ਕੋਈ ਪਤਾ ਨਹੀਂ ਇਸ ਗੱਲ ਦਾ ਜੀ ਕੋਈ ਛਿਪ ਇਹਨਾਂ ਨੂੰ ਗਿਆਨ ਇਹਨਾਂ ਦਾ ਵਿਸ਼ਾ ਹੀ ਨਹੀਂ ਹੈ タルਮੋਂ ਲੋਕਾਂ ਨੇ ਜਿਹਨਾਂ ਲੋਕਾਂ ਨੇ ਗੁਰਵਾਨ ਦੇ ਕੀਤੇ ਨਾਲ ਵਿਸ਼ਾ タルਮ ਨਹੀਂ ਸੀ タルਮੰ ਦਾ ਖੋਜ ਕਰਦੇ ਖਰਾਂ ਕੀ ਅਰਥ ਕੀਤੇ ਨੇ ਕੀ ਨਹੀਂ ਇਹ ਤੁਹਾਡਾ ਵਿਸ਼ਾ ਨਹੀਂ ਹੋਣਾ ਚਾਹੀਦਾ ਹੁਣ ਦੁਬਾਰਾ ਪਹਿਲਾਂ ਹੋਵੇ ਅਰਥ ਕੀ ਨੇ ਇੰਨਾ ਹੀ ਵਿਸ਼ਾ ਹੋਣਾ ਚਾਹੀਦਾ ਤੁਹਾਡਾ ਉਹ ਤਾਂ ਮੰਨੇ ਲਿਆ ਵੀ ਜੀ ਉਹਨੂੰ ਗੱਲ ਨੂੰ ਛੱਡ ਦੇਣਾ ਚਾਹੀਦਾ ਤੁਹਾਨੂੰ ਤੇ ਦਿਨ ਸੰਭਲ ਕਸ਼ਟ ਮਹਾ ਦੁਖ ਅਬ ਚਿਤ ਅਧਿਕ ਪਸਾਰਿਆ ਆ ਕਸ਼ਟ ਦਾ ਤੇ ਉਥੇ ਉਥੇ ਦੁੱਖ ਨੂੰ ਦੁੱਖ ਬੰਦਾ ਸੀ ਉਹ ਦੁਖਦਾਰੂ ਬਣਿਆ ਸੀ ਉਥੇ ਤਾਂ ਅਗਲੇ ਦਿਹੀ ਹੋਈ ਸੀ ਕੋਤੇ ਹੋਇਆ ਦੁੱਖ ਕਰਕੇ ਹੀ ਜੁੜਿਆ ਹੋਇਆ ਸੀ ਜੁੜੇ ਕਰਕੇ ਦੁੱਖ ਮਹਿਸੂਸ ਨਹੀਂ ਸੀ ਉਦੋਂ ਹੁਣ ਜੇ ਤੋ ਅਦਿਕ ਪਸਾਲ ਲਿਆ ਦਿਵਨ ਨਹੀਂ ਹੋਰ ਵਧ ਗਿਆ ਪਹਿਲਾ ਡਿਮਾਂਡ ਇੱਕ ਸੀ ਸਿਰਫ ਸਰੀਰ ਪੜ ਜਵੇ ਬਸ ਹੁਣ ਗਰਭ ਛੋੜ ਮ੍ਰਿਤ ਮੰਡਰ ਆਇਆ ਗਰਭ ਛੱਡ ਕੇ ਮ੍ਰਿਤ ਮੰਡਰ ਚ ਆ ਗਿਆ ਮ੍ਰਿਤ ਮੰਡਰ ਤੋ ਨਰਹਰ ਮਨੋ ਬਿਸਾਰਿਆ ਆਉ ਹੋਈ ਖਰੂ ਛੋੜ ਦੁਨੀ ਤਲਾਇਆ ਨਾਰਾ ਨਾਲ ਨੇ ਹਰ ਮਨੋਬਸਾਲਤਾ ਆਪਣਾ ਮੂਡ ਵਿਛਰ ਗਿਆ ਮਤਰਾਤਵ ਨਹੀਂ ਵਾਛੜਦੀ ਸੋਣੀ ਜੀ ਤੋ ਨਾ ਹੁਬ ਹਰ ਮਨੋਬਸਾਲ ਹਰ ਮਨੋਬਸਾਲ ਆਉ ਮੈਂ ਹਰ ਨੂੰ ਮਨੋਬਸਾਲ ਹਰ ਹਰ ਕਥਾ ਲਾ ਸੁਣੀ ਜੀ ਆ ਹਾਰਤਾ ਹੈ ਹਰਦਾਇਜਾ ਨਾੜ ਕੋਪੜੀ ਜਾ ਜੀ ਨਾੜ ਹਰ ਕਥਾ ਸ਼ਬਦ ਨਹੀਂ ਹੈ ਜੀ ਨਾੜ ਹਰ ਮਨੋ ਬਸਾਰੇ ਨਾੜ ਹਰ ਮਨੋ ਬਸਾਰੇ ਕਿਹੜਾ ਨਾੜ ਹਰ ਨੇ ਮਨੋ ਬਸਾਰੇ ਕੌਣ ਮਨੋ ਬਸਾਰੇ ਹਰ ਹੱਲ ਨੰਬਰ ਥਾਰਿਆ ਨਾ ਮਨੋ ਇਹ ਨੂੰ ਮਨ ਅਪਸਾਰਿਆ ਹਾਂ ਜੀ ਹੱਦੇ ਬਸਾਰਿਆ ਹਾਰੇ ਬਸਰਿਆ ਹਰ ਬਿਸਰ ਸਦਾ ਘਵਾਰਿਆ ਹਰ ਬਸਰਿਆ ਭਾਈ ਇਹ ਉਪੇਥਿਆ ਨਾਲ ਨੂੰ ਸਾਰਨ ਕਥਾ ਲੈਣ ਆਵਿਆ। ਤੋ ਨਰ ਪਰਮਨਉਦ। ਨਰੇ ਆਇਆ ਸੀ ਗਰਭ ਗੋਡਣ ਨਾਲ ਤੇ ਆਦਿਕ ਤੇ ਹੀ ਤਨ ਨਾਲ। ਹਾਲੀ ਨਰ ਨਰ ਗਰਭ ਕੁੰਡਲ ਜਦ ਜਦ ਤੁ ਗਰਭ ਗੋਡਣ ਨਾਲ ਸੀਗਾ ਐਸੀ ਸੀਗਾ। ਨਾਲ ਨਹੀਂ ਪਸਾਰੇ ਹਰ ਨਾਲਾ ਹੁਣ ਕਿਵੇਂ ਲੱਗਿਆ ਦਰਗਰਭ ਕੋਟ ਨੂੰ ਤੇ ਹੁੰਦਾ ਧਿਆਨ ਇਹਨਾਂ ਰੋ ਦਾ ਤਾਂ ਨਾ ਗਰਭ ਕੋਟ ਤੇ ਆਪੀ ਰਹੇ ਪਾਤੋ ਕੀ ਹੁੰਦਾ ਗਰਭ ਤਾਂ ਹੁੰਦਾ ਜਿੱਥੇ ਬੱਚਾ ਆਪਣਾ ਸਰੀਰ ਬਣਾਉਂਦਾ ਓਏ ਜਿਹੜਾ ਇਹਨਾਂ ਦਰਗਰਭ ਕੋਟ ਨਾਲ ਆਇਆ ਹੋ ਗਰਭ ਦੇ ਵਿੱਚ ਕੋਟਦਾਂ ਲੱਗਦੀਆਂ ਕਲੌਟ ਪਹਿਲਾ ਉਹਦੇ ਵਿੱਚ ਤੇ ਅਨਕਲੌਟ ਨੂੰ ਧਿਆਨ ਨਾਲ ਵਾਹੂ ਕਰਦਾ ਉਹ ਧਿਆਨ ਨਾਲੇ ਕਲੌਟ ਚੱਲਦਾ ਉਹਦੀ ਇੱਛਾ ਹੀ ਸ਼ਕਤੀ ਨਾਲੇ ਤੇ ਕਲੌਟ ਵਿੱਚ ਮੂਵਮੈਂਟ ਹੁੰਦੀ ਹੈ ਇੱਛਾ ਸ਼ਕਤੀ ਕਉ ਬਦਲਦੀ ਪੰਨਾ ਤੇ ਮੇਰੇ ਮਨ ਸੇਵਹੁ ਅਲਖ ਨਿਰੰਝਣ ਨਰਹਰ ਜਿਤ ਸੇਵੀਐ ਲੇਖਾ ਛੁਟਿਐ ਧਾਰ ਹਰ ਹਰ ਦੋ ਕਥੇ ਨੇ ਦੋ ਨੇ 1000 ਕੇ ਬਨਣਾ ਇਹ ਉੱਤੇ ਬਣਾ ਉਹ ਸੇਵਾ ਦੇ ਵਿੱਚ ਦੋਏ ਉਹਨਾਂ ਦਾ ਸ਼ਰੀਰ ਵੀ ਆਊਗਾ ਜੀ ਨਰ ਹਰ ਦੋ ਨੇ ਸ਼ਬਦ ਹੈ ਮਨ ਹੋਏ ਇੱਕ ਚਿੱਤ ਇੱਥੇ ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰ ਹਰ ਨਰ ਹਰ ਹਰ ਦੋਹਰ ਦੀ ਸੇਵਾ ਇੱਥੇ ਕੋਮਾ ਲੱਗੇਗਾ ਜੀ ਨਰ ਤੇ ਕੌਮਾਂ ਵਰਗਾਈ ਐ ਇਹ ਜਿਆਦਾ ਪਰ ਨਰ ਮਰ ਕਹਿੰਦੇ ਕੌਮਾਂ ਹੀ ਐ ਅਰੇ ਅਰੇ ਹਰ ਦੌੜੀ ਅੱਗੇ ਹੰਸ ਇਕੱਲਾ ਅੱਗੇ ਜਾਂਦਾ ਫਿਰ ਹੰਸ ਇਹਦਾ ਨਾ ਇਕੱਲਾ ਜਾਂਦਾ ਨਾ ਨਾਲ ਹੈਗਾ ਉੱਥੇ ਚਾਨ ਗੁਪਤੋ ਜਾਂਦਾ ਫਿਰ ਉਹਦਾ ਉੱਥੇ ਨਾ ਸੀ ਐ ਤੇ ਆਨੇ ਹੋਰ ਕੀ ਮੰਦਾ ਤੇ ਆਨੇ ਗੁਪਤੋ ਨਾ ਹੋਵੇ ਕੋਈ ਕੁਝ ਨਾ ਅੰਦਰ ਦਾ ਧਿਆਨ ਹੈ ਉਹ ਦਤ ਰਹਤੇ ਤੇ ਧਿਆਨ ਦਾ ਵਾਅ ਨਹੀਂ ਜਾ ਸਕਦਾ ਅੰਡੇ ਤੋਂ ਜਿੰਨਾ ਚਿਰ ਹੁਕਮ ਉਹਦਾ ਚਲਤੇ ਉਹ ਬਹੁਤ ਜਾ ਸਕਦਾ ਧਿਆਨ ਵਾਅ ਜਾਣਾ ਧਿਆਨ ਅਲੱਗ ਜਾ ਕੇ ਆਪਣੇ ਤੋਂ ਅਲੱਗ ਧਿਆਨ ਕਰਕੇ ਕੋਈ ਕੰਮ ਕਰ ਲਵੇ ਬੋਲਵੇ ਸੰਜਲਵੇ ਬੋਲਵੇ ਅਕੂਦ ਕਰਵੇ ਇਹ ਪਾਵਰਾਂ ਨੇ ਦੇਖੋ ਛੇ ਤਾਂ ਛੇ ਗੁੱਟ ਛੇ ਬਦੇ ਗੁਰਗੁਰੇ ਕੋ ਹਰ ਕੋਈ ਹੈ ਆਬੇ ਗੋਰਾ ਇਹ ਤਾਂ ਗਹਾਂ ਬੋਰਾ ਗੁਰਦਾ ਗੋਰੇ ਕੋਈ ਹੈ ਦੋਇ ਕੋਈ ਨਹੀਂ ਗੋਦ ਗੋਰਾ ਇਕੋ ਕੋਈ ਕੋਈ ਨਾ ਉਹਦਾ ਧਿਆਨ ਆ ਰ ਆਪ ਕੋਈ ਨਹੀਂ ਆਏ ਨੱਕ ਕਾ ਨੇ ਇਹ ਤੇ ਵੇਖ ਦੇ ਇਹਦੇ ਔਜ਼ਾਰ ਨੇ ਐ ਕਹ ਲੋ ਅਠਾ ਆ ਦੂ ਹਥਿਆਰ ਐ ਇਹਨਾਂ ਬਤ ਹਥਿਆਰ ਆ ਜੀ ਬਣਾਉਂਦੇ ਹਥਿਆਰ ਹੁੰਦੇ ਨੇ ਉਹ ਹਥਿਆਰ ਨਹੀਂ ਜਿਹੜੇ ਦੇ ਹੱਥ ਚ ਨੇ ਵਤਨ ਨੂੰ ਹਥਿਆਰ ਵਤਨ ਨੂੰ ਨਹੀਂ ਚੀਦਾ ਨੋ ਲੋੜ ਪੈਂਦੇ ਬਤ ਲੈਣਾ ਬਬਈ ਨਰ ਹਰ ਕਲੀਅਰ ਨਹੀਂ ਹੋਇਆ ਥੋੜਾ ਜਿਹਾ ਮੈਂ ਇੱਕ ਪੰਕਤੀ ਹੋਰ ਹੈ ਜੀ ਨਾ ਦਾ ਨਾਰ ਜਿਹੜਾ ਹੈਗਾ ਇਹ ਕਹਿਣ ਸੁਣਨ ਕੋ ਦੂਜਾ ਪਰ ਇੱਥੇ ਨਰ ਹਰ ਆਪਣਾ ਮੂਲ ਬੁਝਾ ਲਿਆ ਇਹ ਤਾਂ ਕਲੀਅਰ ਹੋ ਗਈ ਲਾਈਨ ਜੀ ਲੇਕਿਨ ਜਿਹੜਾ ਨਰ ਹਰ ਸ਼ਬਦ ਬਾਣੀ ਤੇਹ ਨਾਮ ਦਿਓ ਹਮ ਨਰ ਹਰਤਿ ਆਵਹਿ ਓਹੋ ਹਮ ਨਰ ਹਰਤਿ ਆਵਹਿ ਹਮ ਨਰ ਹਰਤਿ ਆਵਹਿ ਠੀਕ ਹੈ ਜੀ ਜਿਹੜੇ ਕੀਤੇ ਹੋਇਆ ਬਾਣੀ ਦੇ ਉਹ ਤਾਂ ਉਝਾਵੇ ਵਾਲਾ ਕੰਮ ਹੈ ਓਥੇ ਦਾਣੇ ਨੂੰ ਜਦ ਗੁਰੂ ਨੇ ਪਦਛੇਦ ਕੀਤੇ ਲਣ ਕਿਉਂ ਕੀਤੇ ਇਹਨਾਂ ਤਾਂ ਬਗਾਲਣ ਵਾਸਤੇ ਕੀਤੇ ਸੀ ਜੇ ਪਤਛਿਦ ਨਾ ਹੋਣ ਤਾਂ ਹਰ ਬੰਦਾ ਸੰਥਿਆ ਲਵੇ ਆ ਆਏ ਗੱਲ ਉਹਨੇ ਆਪਣੀ ਨੂੰ ਸੌ ਸਾਹ ਜ਼ਬਰਦਸਤੀ ਦੇ ਦਿੱਤੀ ਅੱਜ ਕਰਕੇ ਹਾਂ ਇਹ ਸਾਡੇ ਤੇ ਲੱਦ ਦਿੱਤੀ ਉੱਥੇ ਅਸੀਂ ਹੋ ਜਗੇ ਉਹ ਵੀ ਜੀ ਰਾਤ ਤੇ ਜਦ ਲੋਕਾਂ ਮੂੜਿਆ ਤੂੰ ਕਵਨ ਕੁਮਤੀ ਭਰ ਮਿਲਾਗਾ ਮੂੜਿਆ ਫਿਰ ਪਛਤਾਏਗਾ ਤੂੰ ਕੜੀ ਪੁੱਠੀ ਮੱਤ ਤੇ ਲੱਗਿਆ ਪਰ ਵਿਚ ਬਹਿ ਕੇ ਤੇਰੀ ਕੋਟੇ ਬਸ ਉਹ ਸਰੀਰ ਦਾ ਧਿਆਨ ਹੈ ਤੇਰਾ ਮਾਇਆ ਪੜੀ ਗਿਆ ਤੂੰ ਦਾਤ ਭੈਰੀ ਦਾਤਾਰ ਦਾਤਾਰ ਵਿਸਰ ਗਿਆ ਦਾਸ ਪਿਆਰੀ ਹੋਗੀ ਉਹ ਤੱਤ ਤਾਂ ਕੌਡੀ ਸੰਗਤ ਜਿਵੇਂ ਇੱਕ ਤਾਂ ਕੌਡੀ ਹੈ ਜਦ ਕਹਿੰਦੇ ਕੌਡੀ ਬਦਲੇ ਜਾਏ ਰੇ ਅਸਰੀ ਕੌਡੀ ਆ ਇਹ ਤੇ ਕਰਦੇ ਜਾ ਰਹੇ ਜੀਬ ਤਾਂ ਖਮਾਈ ਕਰਵਾਤੇ ਮਿਹਰੇ ਹੁੰਦੀ ਅਸਿਰ ਦੀ ਸੇਵਾ ਚਲਾ ਕੇ ਮਾਇਆ ਸ੍ਰੀ ਅਦੇ ਸਭ ਜਾਂਗ ਕੇ ਜੋਤ ਕੀ ਸੇਵਾ ਕਰੇ ਤਸੀਹ ਕੋ ਫਿਰ ਖਾਏ ਗੱਲ ਸਰੀਰ ਦੀ ਆ ਮਾਇਆ ਨਾਗਣੀ ਸਰੀਰ ਨਾ ਨਾ ਰੂਪ ਹੀ ਆ ਫਿਰ ਨਾਗੜੀ ਆ ਮਾਇਆ ਜਗ ਤਰੇ ਉਹ ਨੁਕਤਾਏ ਕਿੰਨੇ ਲੁਕਿਆ ਸਰੀਰ ਨੂੰ ਲੱਗਿਆ ਆਪਣੇ ਆਪਣੇ ਚੇਲੇ ਪੋਚ ਫੜਿਆ ਦੀਆਂ। ਯੋਗੀ ਵੀ ਫੱਟਿਆ ਆਇਆ ਜਗ ਤੇ ਵੀ ਯੋਗੀ ਦੀ ਆਗੇ। ਮਾਰਾ ਫੇਰਨ ਵਾਲੇ ਵੀ ਆ ਗਏ। ਅਸਲ ਤੇ ਤਾਂ ਧਰਮਕਾਦਮੀਆਂ ਨੂੰ ਜਗ ਤੇ ਉਹ ਲਗਦਾਏ ਹੋਏ ਰਹਿ ਲੰਟੇ ਮਾਰਾ ਸਰੀਰ ਨਾਲ। ਆਇਆ ਤਾਂ ਕਹਾ। ਮਾਇਆ ਚੰਕ ਕੇ ਹੋਏ ਨੇ। ਕੱਲੇ ਤੇ ਹਰ ਬੰਨਾਂ ਨੂੰ ਕੋਹ ਚੀਤ। ਕੱਲੇ ਤੇ ਹਰ ਆ ਨਾਰਾ ਗਿਆ ਨਹੀਂ ਆ ਗਿਆ ਜੀ ਨਾਰਾ ਜਾਂਦਾ ਤਾਂ ਹਰਮਨ ਨੂੰ ਅੱਜ ਮੇਲ ਕਰ ਦੂੰ ਮਾਇਆ ਚੱਡ ਗਿਆ ਚਿੱਤ ਚਿੱਤਾਂ ਦਾ ਜਿਵੇਂ ਸੀ ਤੇ ਆਰਾਮ ਤਾਂ ਲੱਗਿਆ ਮਤਾ ਨੂੰ ਤਾਂ ਮੈਂ ਕਹਿ ਲਉ ਐ ਨਹੀਂ ਬੋਤਾ ਜੇ ਨਾ ਅੱਜ ਇੱਕ ਨੋਤਾ ਵੀ ਨਾਰਾ ਕਿਵੇਂ ਇਹਨਾਂ ਨੇ ਪਛੇੜ ਹੋਲਡ ਤੇ ਲਾਧਾ ਦਿੱਤਾ ਹੋ ਆਪਣਾ ਫਾਰਮੂਲਾ ਕੋਈ ਦੂਰੀ ਸੰਤੇ ਪੜੇ ਨਾ ਸੜੇ ਹੈ ਇਹ ਪੜਨ ਨਾ ਲਵੀ ਕੋਈ ਹੋਈ ਨਹੀਂ ਸਕਦੀ ਉਹ ਤਾਂ ਬੰਦ ਕੀਤੀ ਸੀ ਉਹਨਾਂ ਨੇ ਡਾਕਟਰ ਫਸੇ ਨਹੀਂ ਬੈਠੇ ਜੀ ਬਾਤ ਆਲੇ ਨਹੀਂ ਛੱਪਦੇ ਨੇ ਹਰ ਸਾੜ ਗਲੁੱਖੇ ਤੇ ਮੁੱਖੀ ਮਾਰੀਆਂ ਹਾਂਜੀ चेत राम नाही जंपुर जाहेगा जे राम दे प्रति चेतन होज में जे राम दे तरु चेता जे रले अंदर है समय ठाट बोलदा राम दे प्रति याद राम की है दशसंतों मुंडा राम नहीं है बण सुणडी छड़ दे राम कथा जुक जुक अचारणा जड़ी ओ दी गल कर ओ ता जुग जुग चल चल होई जी ਉਹ ਤਾਂ ਸਾਜੂ ਕੁੱਝ ਕਥਾਈ ਨੀ ਹੁੰਦੀ ਤੇ ਤੇ ਹੀ ਹੁੰਦੀ ਹੈ ਇੱਕੋ ਕਥਾ ਨਹੀਂ ਨੀ RAM ਦੀ ਉਹ ਤਾਂ RAM ਦੀ ਅੱਗ ਕਥਾ ਇੱਕੋ ਹੀ ਹੈ ਬਦਲਦੀ ਉਹ ਨਹੀਂ ਜੁਗ ਜੁਗ ਨਹੀਂ ਬਦਲਦੀ ਉਹ ਹੁਣੇ ਬਦਲੀ ਪਈ ਹੈ ਬੜਾ ਸੋਕਸ਼ੂ ਦੀ ਰਮਾਈ ਲਿਖੀ ਬਦਲਦੇ ਲੋਕ ਚੇਤ RAM ਨਹੀਂ ਜੰਪੂਰ ਜਾਹੇਗਾ ਜਨ ਤੇ ਰਾਮ ਦਾ ਤਦੂ ਚੇਤਨ ਹੋ ਜਾ ਰਾਮ ਦਾ ਤੇ ਰਾਮ ਦਾ ਤੈਨੂੰ ਪਿਆਰ ਹੋ ਤੇ ਰਾਮ ਹੈ ਕੀ ਇਹ ਬਲ ਜਿਹੜਾ ਸਾਰਿਆਂ ਚ ਦਮਿਆ ਹੋਇਆ ਉਹ ਕੋਲ ਹੈ ਕੀ ਹੈ ਤੇ ਤੂੰ ਜੰਪੂਰ ਵੀ ਜਾਣਾ ਇਹ ਜਮਣ ਦੇ ਵਿੱਚ ਬਾਹਰ ਹੋ ਜਿੰਨਾ ਜੰਪੂਰੀ ਕੀ ਹੈ ਰਾਮਦਰਬ ਜੰਪੂਰੀ ਹੈ ਰਾਮ ਗਰਭ ਤੋਂ ਬਾਹਰ ਨਿਕਲ। ਰਾਮ ਗਰਭ ਤੋਂ ਬਾਹਰ ਨਿਕੰਦਾ ਇੱਕੋ ਤਰੀਕਾ ਹੈ ਰਾਮ ਨੂੰ ਜਾਣ ਦਾ। ਤੇ ਤੂੰ ਮਰਦਾਈਂ ਰਾਮ ਨਾ ਜਾਣਿਆ। ਕਬੀਰ ਕਹਿੰਦਾ ਨਾ। ਜੀ। ਅਬ ਕੈਸੇ ਮਰੂ ਮਰਨ ਮੰਨ ਮੰਨਿਆ? ਕਹਿੰਦਾ ਕਬੀਰ ਕਹਿੰਦਾ। ਕਬੀਰ ਨੇ ਕਹਿੰਦਾ ਨਾਰ ਕਹਿੰਦਾ ਹੈ ਨਾਰ ਬੋਲਦਾ ਅਬ ਕੈਸੇ ਮਰੂ ਮਰਣਾ ਮਨ ਮੰਨਦਿਆ ਕਦ ਨ ਮਾਰ ਮਾਰ ਗਿਆ ਜੀ ਨਾਮ ਨਹੀਂ ਜਾਣਦੇ ਮਰ ਕਿਉਂ ਜਾਂਦੇ ਨਹੀਂ ਨਾਮ ਜਾਣਿਆ ਨਹੀਂ ਜੇ ਨਾਮ ਜਾਣ ਲਿਆ ਜਿਹੜਾ ਰਾਮ ਦੇ ਪ੍ਰਤੀ ਚੇਤਨ ਹੋ ਗਿਆ ਇਹਨੂੰ ਰਾਮ ਦਾ ਚੇਤਾ ਆ ਗਿਆ ਰਾਮ ਬੋਲਿਆ ਹੋਇਆ ਵਿਸਰਿਆ ਹੋਇਆ ਹਰ ਵਿਸਰਿਆ ਹੋਇਆ ਰਾਮ ਵਿੱਚ ਰਾਮ ਨੂੰ ਹਰਦਾ ਉਹਦਾ ਕਹਿੰਦੇ ਨੇ ਹਰੀ ਦਾ ਉਤਾਰ ਹਰੀ ਵਿਸ਼ਨੂੰ ਕਹਿੰਦੇ ਨੇ ਉਹਦਾ ਉਤਾਰ ਹੈ ਰਾਮ ਉਤਾਰ ਉਹਦਾ ਰਾਮ ਹਰੀ ਦਾ ਹਰੀ ਨਹੀਂ ਹੈ ਜਿਹੜੀ ਉਤਾਰ ਬੰਦੇ ਨੇ ਉਹਦਾ ਹਰੀ ਦਾ ਹਰੀ ਤਾਂ ਹੈ ਅਸਲੀ ਰਾਮ ਨਹੀਂ ਕਹਿਣਾ ਅਸਲ ਬੜੂ ਦਾ ਇਹ ਉਹਦਾ ਉਤਾਰ ਹੈ ਜਿੰਨਾ ਖਾਲਸਾ ਉਤਾਰ ਹੈ ਜਰੀਰਤਾ ਆਲੂ ਦਾ ਨਾਮ ਆਤਮ ਆਪਰ ਆਇਆ ਤਾ ਤੁਮ ਕਿਦੂ ਇਹ ਦੇਤਾਰੀ ਰਾਮ ਉਹਦੇ ਰਖਾਰੀ ਰਾਮ ਸੋ ਤੇ ਬਿਜਰੋ ਚਾਹ ਜਲਾ ਜੁੜਨਾ ਸੀ ਨਰਾਕਾਰੀ ਨਾਮ ਨਾਲ ਦੇਤਾਰੀ ਨਾਲ ਨਹੀਂ ਜੁੜਨਾ ਦੇਤਾ ਜੀ ਉਹ ਸਾਡੇ ਕੋਲ ਕਹੀਏ ਦੇਤਾ ਅਸੀਂ ਸਾਰੇ ਰਾਮ ਹੈਾਰੇ ਰਾਮ ਦੇ ਉਤਾਰਾਂ ਸੀ ਹਾਰੇ ਰਾਮ ਕੀਨਸਾ ਉਹ ਕਵੀਤੂ ਰਾਮ ਕੀਨਸਾ ਅਹ ਫਰਕ ਜਾਣਨਾ ਹੈ ਕਰਨ ਜੋਤ ਜੋਤ ਦਾ ਸੋਈ ਜੇ है ਇਹ ਗੱਲ ਸੱਚ ਹੈ ਸਭ ਮੈਂ ਜੋਤ ਜੋਤ है ਸੋਈ ਇੱਕੋ ਜਿਹਾ ਹ ਸਾਰੇ ਹੀ ਰਾਮ ਕੀ ਅਰਥ ਨੇ ਸਾਰੇ ਹੀ ਰਾਮ ਨੇ ਸਾਰੇ ਹੀ ਕ੍ਰਿਸ਼ਨ ਨੇ ਸਾਰੇ ਆਨੰਦ ਨੇ ਬਿਸ਼ਨ ਨੇ ਵੱਖਰਾ ਬਿਸ਼ਨੂ ਕੋਈ ਨਹੀਂ ਹੈ ਬਿਸ਼ਨ ਕੇ ਮਾਇਆ ਤੇ ਹੋਏ ਤੈਨੂੰ ਸਾਰੇ ਹੀ ਸ਼ਬਦ ਜੇ ਇਕ ਤਵੇ ਹੀ ਨਾ ਉਹਨੇ ਸਾਰੇ ਇਹ ਸਭ ਦੇ ਅੰਦਰ ਉਹਦੇ ਜੋਦਨੋਂ ਨੇ ਜਿਸਕ ਵੀ ਉਸੇ ਦਾ ਨਾਮ ਉਹ ਬਾਹਰ ਜਿਹੜਾ ਕਸ਼ਰ ਬੈਠਾ ਨਾ ਟਬਲਾ ਉਹ ਵੀ ਮਾ ਤੇ ਹੋਣਾ ਬਾਦਗਰਕਾਰੀ ਇਹਦੇ ਸੁਪਾਤ ਜਿੰਦੂਆਂ ਦਾ ਬਣਾਇਆ ਹੋਇਆ ਇੱਕ ਵੀ ਸਾਨੂੰ ਗੁਰਬਾਣੀ ਮੰਨਦੀ ਵੀ ਬੈਸ ਸੋ ਪ੍ਰਸੰਨ ਜੀ ਜਿਸਨ ਕੇ ਮਾਇਆ ਤੇ ਹੋਏ ਪਰ ਜਿਹੜਾ ਮਾਇਆਪਤੀ ਵਸਨ ਹੋਰ ਹੈ ਉਹ ਤੇਰੇ ਅੰਦਰ ਹੀ ਹੈ ਉਹ ਤੇਰੇ ਸਰੀਰ ਮਾਲਕ ਹੈ ਬਾਗੀ ਹੋਇਆ ਹੈ ਬਾਗੀ ਹੋ ਕੇ ਮਾਲਕ ਬਣਿਆ ਹੈ ਮਨ ਮਾਵਾ ਫਿਰ ਆ ਜਾ ਸਮਝਾ ਦਿੱਤਾ ਸਰੀਰ ਤੇ ਜਿਹੜੇ ਕੰਮ ਰਾਤਨ ਫੀਰ ਬਣਾਇਦਾ ਉਹ ਕੰਮ ਨਹੀਂ ਲੈ ਰਿਹਾ ਉਹ ਤੇ ਹੋਰ ਕੰਮ ਲੈ ਰਿਹਾ ਉਲਟਾ ਸਰ ਪੈਸਾਊਗਾ ਪੈਸਾਏਗਾ ਮੂੜਿਆ ਉਹੀ ਗੱਲ ਕਹੀ ਹੈ ਨਾ ਜੀ ਜੋ ਉਠੀ ਮਾਤ ਤੇ ਲਾ ਗਿਆ ਤੂੰ ਉਠੀ ਮਾਤ ਤੇ ਲਈਆ ਸੰਸਾਰ ਚਾਕੇ ਉਠੀ ਮਤ ਲਈਏ ਹੋਰੇ ਤਾਂ ਡੁਪਲੀਕੇਟ ਧਰਮ ਅਪਣਾ ਲਿਆ ਡੁਪਲੀਕੇਟ ਥੇ ਦੁਕਾਨਾਂ ਖੁੱਲੀਆਂ ਜਾਂ ਧਰਮ ਦੀ ਬੋਇ ਤੋਂ ਬਾਅਦ ਕਹਿਣਾ ਕਿ ਕੁਮਤਾ ਲੱਗ ਗਿਆ ਹੈ ਤੂੰ ਲੱਗਿਆ ਜੀ ਨਾ ਪੁੱਠੀ ਮੱਤੇ ਜੰਪੂਰ ਕੀ ਉਹਦੀ cheat ram ਨਾ ਹੀ ਜੰਪੂਰ ਚਾਹੇਗਾ ਜੰਪੂਰ ਜਿੱਥੇ ਜਮਾਉਣ ਵਾਲਾ ਜਿੱਥੇ ਧਰਮ ਰਾਜ ਉਹਨਾਂ ਪਾਪ ਜੋ ਵੀ ਦੇ ਸਭ ਧਰਮ ਰਾਏ ਕੇ ਜਾਏ ਧਰਮ ਰਾਜ ਜੰਪੂਰੀਏ ਇੱਥੇ ਬੈਠਾ ਜੀ ਨੂੰ ਸੁਣ ਕੇ ਨਾ ਜੰਪੂਰੀ ਆਹੋ ਉੱਤੇ ਪੜ ਕੇ ਲਿਜਾਣ ਦੇ ਜੰਮ ਕਈ ਜੰਮ ਦੂਤ ਨੇ ਜੰਮ ਕੇ ਦੂਤ ਇਹ ਨੇ ਜਿਹੜੇ ਪ੍ਰਚਾਰ ਕਰਨ ਦੇ ਧਰਮ ਗਿਆਨ ਦਾ ਪ੍ਰਚਾਰ ਕਰਨ ਵਾਲੇ ਜਿੰਨੇ ਵੀ ਪਰਮ ਗਿਆਨੀ ਦੇ శాఖਤ ਨੇ ਜਿਹੜੇ ਪੁਰਾਣੇ ਪੂਰ ਡੋਬ ਰਹੇ ਨੇ ਇਹ ਕੌਣ ਨੇ ਜਿਹੜੇ ਨੇ ਜੰਪੂ ਲਈ ਜੰਮ ਨੇ ਜਿਹੜੇ ਮਾਇਆ ਜੋ ਦੇ ਵਿਚੇ ਰੱਖਣਾ ਚਾਹੁੰਦੇ ਨੇ ਜਿਹੜਾ ਘੜ ਉਥੀ ਆ ਸੀ ਉਹਨਾਂ ਨੇ ਕਿਹਾ ਪਰਿਵਾਰ ਉਹ ਜਬਦੂ ਤੇ ਚੰਬੜੇ ਤੇ ਚਾਹੁੰਦੇ ਤਾਂ ਇੱਥੇ ਰਹੀਏ ਸਾਰੇ ਜਿਹੜੇ ਵੀਰੇ ਬੰਸਤੇ ਜਬਦੂ ਤੇ ਤੇ ਉਹ ਉਹ ਨਹੀਂ ਚਲੇ ਉਦੇਸ਼ੀ ਕਹਿੰਦੇ ਸਦਾ ਅਸ਼ਰਦਾ ਜਾਏਗਾ ਨਹੀਂ ਕਹਿੰਦੇ ਜਾਹੇਗਾ ਜਾਇ ਲਫਜ਼ਾ ਜੰਮਣ ਨੂੰ ਬੈਠੇ ਜਾਇ ਹੁੰਦਾ ਨਹੀਂ ਹਾਂਜੀ ਜਾਇ ਦਾ ਮਤਲਬ ਜਮੇਗਾ ਜੱਜੇ ਨੂੰ ਕੰਨਾ ਹਾਹਿਦੋ ਸਿਹਾਰੀ ਗੱਗੇ ਨੂੰ ਕੰਨਾ ਪਾਈ ਜੇ ਜਾਇ ਹੁੰਦਾ ਜਾਇ ਆਪਣੇ ਖਾਏ ਜਾਇ ਲਫਜ਼ਾ ਹੋਇਆ ਜਾਇ ਦਾ ਆਪਣੇ ਜੰਮੇ ਹੋਏ ਜਾਣਾ ਨਹੀਂ ਜਾਇ ਦਾ ਜਾਇ ਦਾ ਮਤਲਬ ਜਾਇ ਹੇਲਾ ਨੂੰ ਹੁੰਦਾ ਜਾਏ ਤਾਂ ਆਪਣੇ ਜੰਮੇ ਹੋਏ। ਜਾਏ ਆਪਣੇ ਖਾਏ ਦੀ। ਹਾਂਜੀ। ਕਿਉਂਕਿ ਜਾਏ ਹੁੰਦਾ ਫਿਰ ਉਹਦਾ ਅਸ ਕੀ ਹੁੰਦਾ। ਇਹ ਕਰਕੇ ਹਾ ਹਵਰਤੇ। ਇਹ ਸਮਝਿਆ? ਦੀ ਗੱਲ। ਜਾਏ ਆਪਣੇ ਖਾਏ ਘੜਦਨ। ਤਲਪੜੀ ਹੋ ਕੇ ਉਤਰੇ ਜਾਏ ਆਪਣੇ ਖਾਏ। ਹਾਂਜੀ ਉੱਥੇ ਈੜੀ ਨਾਲ ਜੀ। ਫ਼ਿਰ ਜਾਇ ਜੀ ਲਿਓ ਤੇ ਹਾਂ ਹਾਂ ਜੇ ਜਾਏ ਬੋਲਣਗੇ ਜੀ ਲੱਗੂ ਹਾਂਜੀ ਹਾਂਜੀ ਜੇ ਜਾਏ ਆਤਮੀ ਬਨੂ ਤੇ ਆਥਰ ਜਾਇਦਾ ਅੱਛੀ ਲੱਗੋਗੇ ਜੇ ਜਾਏ ਹੋਵੇ ਆਪਣੀ ਜਮੇ ਹੋਏ ਆਪਣੀ ਜਾਣ ਦੀ ਫੈਸਲਾ ਲੈਣੀ ਹੈ ਆ ਲੱਗੂ ਅਸੀਂ ਜੱਡੀ ਪੰਜਾਬੀ ਬੋਲੀਏ ਬਿਲਕੁਲ ਗਲਤ ਬੋਲਦੇ ਆ ਤਹਾਇਦਾ ਸੀ ਫੱਕੀ ਬੇਸ ਕੀਤੀ ਹੈ ਗੁਰਬੰਦੀ ਜੀ ਉਲੂ ਵੀ ਜਾਏ ਕਹਿੰਦੇ ਹਨ ਉਲੂ ਵੀ ਜਾਏ ਕਹਿੰਦੇ ਹਨ ਉਹ ਜਾਏ ਉਹ ਜਾਏ ਅਭਿਦੀ ਲੱਗਣਾ ਹਾ ਬੋਲੀ ਡਿਫੈਕਟਿਵ ਆ ਮਨਮੁਖੀ ਬੋਲੀ ਹੈ ਇਹ ਤਾਂ ਸ਼ੁੱਧ ਕਰਦੇ ਤੇ ਬਾਣੀ ਵੇਖਣ ਮੇਰੇ ਮੇਰੀ ਜਨਤਾ ਦੀ ਅਲਸੋ ਜੰਮ ਨੇ ਚੇਤਰਾਮ ਨਾਹੀ ਜੰਪੁਰ ਜਾਹੇਗਾ ਅਰਾਮប្រតិ ਜੇਤਨ ਹੋ ਜਾ ਜਾਗਰੂਪ ਹੋ ਜਾ ਫੇਤੀ ਜੰਪੁਰ ਵੀ ਜਾਂਦਾ ਫੇਤਰਾ ਜਿਹੜਾ ਲੇਖਾ ਪੜਜੂਗਾ ਨੌਂ ਕਿੰਤਾਂ ਦਾ ਲੇਖਾ ਪਾਟਿਆ ਉਹ ਲੇਖਾ ਨਹੀਂ ਹੁੰਦਾ ਉਹ ਰੋਣਾ ਜਦ ਗਿਆਨ ਤੇ ਆਉਂਦਾ ਕਰਮੇ ਨਾਲ ਕਰਮ ਦਾ ਹੀ ਲੇਖਾ ਕਰਮ ਨਾਲ ਹੀ ਵਜਨ ਦਾ ਵੇ ਕਾਲ ਨਾ ਨਾਸ ਹੋ ਜਾਂਦਾ ਕਾਹ ਗੁਣ ਤੇਰੇ ਸਾਧਗੁਰੂ ਜੇ ਕਰਮ ਨਾ ਨਾਸ ਹੈ ਇਹ ਜੀ ਜੇ ਤੁਨ ਮੇਰੀ ਨਾਸ ਕਰਦਾ ਤੇਰੇ ਗੁਣ ਕਾਦੇ ਹੋਏ ਬਈ ਮੇਰੇ ਕਰਮ ਤੋਂ ਨਾਸ ਕਰ ਲੈ ਮੇਰੇ ਬੁੱਲੇ ਹੋਏ ਕਰਮ ਨੇ ਉਹ ਮੇਰੇ ਬਲੀਦ ਕਰਾ ਦੇ ਸਮਝਾ ਕੇ ਹੋ ਕੀ ਕਰ ਸਕਦਾ ਨਹੀਂ ਮੈਂ ਬਲੀਦ ਹੋ ਜਾਊਂਗੀ ਤੂੰ ਵੀ ਜਿਆਦਾ ਚੰਗੇ ਬਲੀਦ ਹੋ ਗਏ ਜਨ ਵਿੱਚ ਰੈ ਅਨਰਾਦਾ ਜਨ ਵਿੱਚ ਰੈ ਅਨਰਾਦਾ ਬਾਗ ਭਰ ਆਇਆ ਖੁੱਲਾ ਵਿਚਰੇ ਬੰਦਨਾ ਦਾ ਬੋਗਤ ਹੋ ਕੇ ਵਿਚਰਨਾ ਬਸ ਆਜ਼ਾਦੀ ਨਾਲ ਵਿਚਰਨਾ ਅਨਰਾਦਾ ਆਜ਼ਾਦੀ ਨਾਲ ਰਾਤ ਤੋਂ ਬਾਅਦ ਬੰਦਨ ਬੋਗਤ ਰਾਤ ਦਾ ਵਿੱਚ ਨਾ ਜਿਹੜੀ ਉਹ ਮੰਕਲੀਆ ਬੰਦੂਆਂ ਦੇ ਵਿਚਾਰਾ ਰਾਤ ਦਾ ਉਹ ਤੇ ਜੀ ਰਾਦਾ ਨਹੀਂ ਹੈ ਹਾਂਜੀ ਆਪਰੇ ਨੂੰ ਜਵਰ ਨਾਲ ਹੀ ਹੋਤਾ ਨਮਾਇਆ ਫਿਰ ਉਹ ਜਨ ਵਿਚਰੇ ਅਨਰਾਦਾ ਉਹਦਾਂ ਮੋਤਵ ਦਾ ਬਿਚਰੇ ਨਰਪਾਇ ਹੋ ਕੇ ਬਿਚਰੇ ਚਲਣਾ ਨਹੀਂ ਕਹਦੇ ਦਰਪਰ ਹੋ ਕੇ ਕਹਿ ਲੋ ਹੋਏ ਪਜੋਗੋ ਵਾਨ ਤੈ ਬੁਕਤੋ ਕੇ ਜੇ ਅਸੀ ਪੁੰਨ ਪਾਪ ਕੇ ਵਿੱਚ ਬੁੰਨੇ ਹੋਇਆ ਐ ਐਸੀ ਪੈਦੇ ਵਿੱਚ ਆ ਬੂ ਵੀ ਲੇਖਾ ਨਹੀਂ ਆਤੀ ਇਹ ਆ ਬੋ ਜੰਮਦੂ ਦਤਾਰੈ ਅਰ ਬੁਕਤੋ ਹੋ ਕੇ ਬਿਚਰੇ ਕੋਈ ਜੰਮਦੂ ਹੁੰਦਾ ਹੀ ਨਹੀਂ ਕੋਈ ਲੇਖਾ ਹੁੰਦਾ ਹੀ ਨਹੀਂ ਮੈਂ ਉਲਫਾਬ ਕੋਈ ਜਿਹੜੀ ਤੁਨ ਬਾ ਮੈ ਵਾਦਾ ਹੀ ਨਹੀਂ ਫਿਰ ਆਏ ਗੁਣ ਤੋਂ ਕੋ ਬਿਸਰ ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹੇ ਵਿਆਪੈ ਉਹ ਬਾਲ ਦੇ ਵਿੱਚ ਪਹਿਲਾ ਬਚਪਨ ਵਿਨੋਦ ਆਜਾ ਦਾ ਪਾ ਹੁੰਦਾ ਨਾ ਲਾਡ ਪਿਆਰ ਖੇਲਣਾ ਬੱਚਿਆਂ ਨਾਲ ਬੱਚੇ ਵੀ ਖੇਲਦੇ ਮੋਬਾਈਲ ਲੈਨੇ ਉਹ ਜਲਦੀ ਬਨੂ ਹੁੰਦਾ ਉਹ ਖੁਸ਼ੀ ਜਿਹਦੇ ਵਿੱਚ ਕੋਈ ਈਰਖਾ ਨਾ ਹੋਵੇ ਬਾਅਦ ਬੁਰਾ ਨਾ ਹੋਵੇ ਬੱਚੇ ਰਾਜਾ ਹੁੰਦਾ ਨਾ ਬਾਲਗੁੱਧ ਉਹ ਜਾਂ ਤਾਂ ਉਹ ਹੁੰਦੀ ਆ। ਪਿਆਰ ਸੰਤ ਦੀ ਉਹ ਗੁੱਦਬਾਦ ਹੋਦੋ ਜੇ ਉਹ ਬਦੂਦੀ ਹੁੰਦਾ। ਉਹਦੇ ਵਿੱਚ ਜਿਹੜੀ ਉਹ ਗੱਲ ਕਰਦੇ ਨੇ ਇੱਕ ਦੂਜੇ ਨਾਲ ਪ੍ਰੇਮ ਦੀ ਉਹਨੂੰ ਵਿਰੋਧ ਕਰ ਦਿੰਦੇ ਉਹ ਨਹੀਂ ਹੈ। ਉਹ ਬਹੁਤ ਲੱਗਦਾ ਪਰ ਹੁੰਦਾ ਵਿਰੋਧ ਆ। ਨੰਨਾ ਨਮ ਉਹਦੀਆਂ ਹੁੰਦੀਆਂ ਨੇ। ਉਹ ਵਰਗੇ ਹੁੰਦੀਆਂ ਨੇ। ਸੰਸਾਰ ਦੇਖਣ ਨੂੰ। ਨਾਲ ਗਿਆ ਰੁਕੇ ਜਾਈ ਹੁੰਦਾ ਦੇਖਣ ਨੂੰ। ਬਦਲੋ ਦੋਦਿਆ ਐ ਉਹ ਜਿਆਨ ਦੋਦ ਦਾ ਵੇਖਦੇ ਤਹਿ ਤੋਦੂ ਉਹ ਵੇਖਦੇ ਤਹਿ ਜਿਹੜੇ ਸਮੂਦੂ ਨੂੰ ਬਨੋਦ ਜਾਂਦੇ ਬਾਲ ਬਨੋਦ 55 ਦੇ ਵਿੱਚ ਜਿਹੜਾ ਬਨੋਦ ਹੁੰਦਾ ਉਹਦੇ ਚ ਬਾਰ ਬਨੋਦ ਦੀ ਬੁੱੱਤੇ ਚਿੰਦ ਰਸ ਲਾਗਾ ਵਾਸੇ era ਅਸਲ ਗਿਆ ਸੀ ਉਹ ਬਦਲਦਾ ਬਦਲਦਾ ਹੋਜ ਬਦਲਦਾ ਆਤਾ ਬਲੋ ਤੇ ਸ਼ੁਰੂ ਹੋਇਆ ਸੀ ਹੋਣੀ ਹੋਣੀ ਹੋਣੀ ਤੇਰਾ ਮੇਰਾ ਹੋਣਾ ਅਜੀਬ ਅੱਤੇ ਆ ਤੇਰੀ ਜੀ ਲੈ ਲੀ ਉਹ ਸੇ ਹੋਰ ਸਤ ਵਿੱਚ ਗਏ ਤੇਰੀ ਉਹ ਤੇਰੀ ਮੇਰੀ ਐਸੀ ਬੰਗਿਆ ਉਹ ਚੱਲ ਜੀ ਚਲੀ ਜੀ ਉਪੱਕ ਆ ਜਾ ਇਹਦੀ ਚੀਜ਼ ਕਿੰਨਾ ਹੀ ਅਵ ਬੱਟ ਬੱਟ ਤਾਂ ਮਜ਼ਾਕ ਹੀ ਕਹਦੇ ਸੀ ਉਹ ਮਜ਼ਾਕ ਵਾਲੀ ਗੱਲ ਸੱਚ ਬੜਨਾ ਦੀ ਹੋਵੇ ਅਰਾਧ ਬਦਲ ਜਾਂਦਾ ਬੋਤੋ ਖਟਾਸ ਪੈਦਾ ਹੋ ਜਾਂਦੀ ਰੋਜ਼ ਰੋਜ਼ ਦੇ ਵਿੱਚ ਮਿਠਾਸ ਹੁੰਦਾ ਜਾਂ ਤਾਂ ਖਟਾਸ ਬਣ ਜਾਂਦਾ ਨਾ ਫਿਰ ਅੰਦਰ ਤੇਰੀ ਮੇਰੀ ਜਦ ਫੇ ਮੇਰੀ ਤੇਰੀ ਕਹਿੰਦਾ ਫੇ ਖਟਾਸ ਪੈਦਾ ਹੋ ਜਾਂਦੀ ਭਾਈਆਂ ਚ ਵੀ ਖਟਾਸ ਹੋ ਜਾਂਦੀ ਕੋਚੇਂਦਰਾ ਸੁੰਦ ਚਿੰਦਰਾਸ ਜੀ ਕਦ ਆਸ ਵਾਸ ਹੋ ਜਰੀ ਬਦਲ ਦੇ ਖਿੰਖਿਨ ਮੋਹ ਵਿਆਪਿਆ ਔਰ ਥੋੜਾ ਥੋੜਾ ਕਰਕੇ ਮੋਹ ਵੱਧ ਗਿਆ ਜਿਦਾ ਵਿਰੋਧ ਬਦਲ ਕੇ ਮੋਹ ਵੱਧ ਗਿਆ ਵਕੀਰ ਨਾ ਜੋ ਲਕੇ ਨੂੰ ਨਾਲੇ ਨਾਲ ਸਮਝਾਇਆ ਜਾਵੇ ਨਾ ਪਤਾਇਆ ਜਾਵੇ ਵਕੀਰ ਪੱਕੀ ਹੋ ਜਾਂਦੀ ਔਰ ਇਹ ਹੋ ਰਿਹਾ ਜੀ ਉਗੀਰ ਤਾਇਨੀ ਜਲੀ ਲਕੀਰ ਨਾ ਪਵੇ ਉਹਦੇ ਲਈ ਕੀ ਕਰਨਾ ਪਵੇਗਾ ਗੁਲਬਾਨੇ ਡੈਡੀ ਨੇ ਡਿਡੀ ਕਹਿਦਾ ਹੋਂਦਾ ਇਹ ਤਾਂ ਉਹੀ ਹੁੰਦੀ ਹੈ ਮੁਜਾਦ ਤੇ ਬਚਪਨ ਤੋਂ ਪੜਾਈ ਕਰਾਣੀ ਪਵੇਗੀ ਹਾਂ ਬਚਪਨ ਦੀ ਚੜਾਈ ਉਦੋਂ ਬਚਪਨ ਤੋਂ ਕਰਾਈਆ ਉਹ ਯਾ ਪਰ ਉਹਨੂੰ ਲੋੜੇ ਬਹੁਤ ਆ ਰਾਂਗਾ ਮੈਂ ਵੇਢੀ ਬਣਾਉਣਾ ਬਹੁਤ ਹੈ ਨਾ ਮੰਮੀ ਚਾਹਤਾ ਫੇਲਾਉਗੀ ਚੱਲਣੇ ਕਰ ਲਈਏ ਉਹਦਾਂ ਮੈਂ ਜਣੂ ਕੋ ਲੋੜਾ ਨੇ ਬਹੁਤ ਜੀ ਹਾਂ ਇਹ ਬੱਚਾ ਸੋਚਦੇ ਆ ਵੀ ਆਪਾਂ ਬੱਚੇ ਨੂੰ ਕਾਹਨੂੰ ਵਜੇ ਇਸ ਪਾਸੇ ਲਾਣਾ ਹੈ ਤੱਕ ਪੜ੍ਹਾਈ ਕਰ ਲਵੇ ਵੱਡਾ ਹੋਏਗਾ ਫੇ ਇਧਰ ਲਾ ਲਾਂਗੇ ਪੜਾਈ ਥੋੜੀ ਹੈ ਤਾਂ ਇਹ ਤਾਂ ਦਵਾਨ ਪੇਜ ਹੁੰਦਾ ਉਹ ਦੂਜੇ ਨੂੰ ਕਰਦਾ ਇਹਨਾਂ ਦੀ ਬੁੱਧੀ ਤੇਜ ਹੁੰਦੀ ਹੈ ਅਮਨ ਦੂਦਦੀ ਜਦੋਂ ਇਹ ਪੜਾਈ ਸਿੱਖਿਆ ਮਿਲੇਗੀ ਤਾਂ ਨੇਚਰਲੀ ਉਹ ਤੇਜ ਜਾਏਗਾ ਜੀ ਲੈ ਜਾਊਗਾ ਬੁੱਧੀ ਤੇਜ ਆ ਦੂਏ ਬੁੱਧੀ ਬਾਹਰ ਹੁੰਦੀ ਆਕਲ ਦੋਈ ਭਲਾਈ ਦਾ ਦਬੋਲ ਬੋਦੀ ਉਤੇ ਉਹ ਤਾਂ ਹਰ ਚੰਨ ਜਦਸ ਪਾਰ ਹੈ ਉਹ ਤਾਂ ਖੋਤੇ ਤੇ ਚੰਨ ਲੱਗਦੇ ਰਹੇ ਤੁਸੀਂ ਦਬੋਜ ਹੈ ਇਹਨੇ ਪਾਰ ਕਰਦੀ ਹੈ ਪੜਾਈ ਉਹ ਪੜ੍ਹੇ ਨਹੀਂ ਦਿੰਦੀ ਰਸ ਮਿਸ ਮੇਡ ਅਮੇਤ ਚਾਖੀ ਅਜਲੇ ਰਾਸ ਨੇ ਵੇਖਿਆ ਰਲੀ ਹੋਈ ਆ ਉਹ ਬਿਕਰ ਵਾਲੀ ਵਿੱਚ ਇਹ ਖੰਦਾ ਰਿਹਾ। ਵਾਇਦਾ ਮੋੜ ਰਲ ਗਿਆ ਦੁੱਖਿਆ ਬੰਦੇ। ਜਿਹੜੇ ਰਾਸਤੇ ਵਿੱਚ ਹੋ ਗਏ ਉਹ ਦੁੱਖ ਬਚਾ ਪ੍ਰੇਮ ਦੇ ਵਿੱਚ ਮੋੜ ਰਣ ਗਿਆ ਇੱਕ ਬੰਦੇ। ਜਿੱਤੇ ਪ੍ਰੇਮ ਸੀ ਨਾ ਪਹਿਲਾ ਬਚਪਨ ਜਿਹਾ। ਜੀ। ਉਹ ਰਲ ਗਈ ਮੋਹ ਦੀ। ਮਾਇਆ ਦੀ। ਬੱਜ ਕੇ ਉੜ ਗਿਆ ਜਾਨ ਕੇ ਗਿਆ ਉੜ ਗਿਆ ਦੇਖ ਬੰਦ ਇਹ ਚਾਹ ਰੇ ਇਹ ਘੱਡਾ ਦੇ ਰਸ ਮਿਸ ਮੇਦ ਅੰਮ੍ਰਿਤ ਵਿਖ ਚਾ ਕੀ ਤਉ ਪੰਚ ਪੰਜ ਬਕਾਰ ਪ੍ਰਗਟ ਹੋ ਕੇ ਤੇ ਸੁਦਾ ਫਲਾ ਹੋ ਗਿਆ ਪੂਰਾ ਕਲੇਸ਼ ਪੈ ਗਿਆ ਭਾਗ ਜੈ ਗਿਆ ਨਾ ਭਾਗ ਜੀ ਪੂਰਾ ਵਿਰੋਧ ਹੋ ਗਿਆ ਭਾਈਓ ਦਾ ਉਹ ਰੋ ਰੋ ਕੇ ਗੱਭੋ ਪੀਉਦਾ। ਕੋਈ ਨਾ ਕਰਾਜ ਪੂਰਾ ਹੁੰਦੇ ਜੀ ਹੁੰਦੇ। ਉਹ ਇਹਦੇ ਛੋੜੀ ਪੈਦਾ ਹੋਣੀ। ਅੰਦਾ ਭੜਾ ਹੋਊਗਾ। ਅੰਦੇ ਤਾਂ ਪ੍ਰਗਟ ਹੋ ਗਏ। ਕਹਿੰਦਾ ਜੀ ਨੇ ਤਾਂ ਬਲਮਾਲ ਨਾ ਪੈਦਾ ਕਰਾਉਣ ਨਾ ਕੋਈ। ਪੈਦਾ ਉਹ ਵੇਲੇ ਦੇਖਿਆ ਨਹੀਂ ਤੇ ਜਾ ਘੇਰਦਾ თან ਗਦਾ ਪੀਨੇ ਤਬਦਲ ਨਾ ਹਦਾ ਦੁਖ ਹੰਤਾ ਸੁਖਰਾ ਦੁਖੜੇ ਹੋ ਗਏ ਤੇ ਨਾਲ ਚ ਦੁਖ ਠੀਕ ਉਫੀ ਦੁੱਖ ਕਰ ਤੇ ਆਉਂਦੇ ਨੇ ਦੁਖ ਜਪ ਤਪ ਸੰਜਮ ਛੋੜ ਸੁਖਿਰਤ ਮਤ RAM ਨਾਮ ਨ ਅਰਾਧਿਆ ਜਪਤਾ ਤੁਜੰਤਾ ਗੋਗਲੇ ਜੀ ਨਾਲਿਆ ਜਪ ਕੀਤੇ ਰਾਮ ਨੂੰ ਜਦੋਂ ਤੱਕ ਚੇਤਨੂ ਜਪ ਸੀ ਨਾਮ ਨੂੰ ਜਨਨਾ ਨੂੰ ਹੰਗ ਜਪ ਸੀ ਨਖਲੇ ਰਾਮ ਜਨਨ ਅਸਲੀ ਨੂੰ ਬੁਲਦੋ ਇਹ ਕੱਪ ਸੀ ਦੁਨੀਆ ਨਖਲੇ ਨੂੰ ਬਲਦੀ ਹੈ ਤੇ ਅਸਲੀ ਦੀ ਬੁਲਦੋ ਮਾਨੇ ਬੰਨਣਾ ਨਹੀਂ ਮਾਨੂੰ ਬੁਲਾਉਂਦੇ ਕੱਪ ਜਵਰਸਾਤੀ ਲਾਗੂ ਕਰ ਮਨ ਨੂੰ ਦੰਦਲ ਆਤਮਾ ਜਪ ਤਪ ਸੰਜਮ ਆ ਛੋੜ ਸੁਕਿਰਤ ਮਤ ਕੋ ਕਰ ਤ ਤਾਲਾ ਜਪ ਤਪ ਸੰਜਮ ਛੱਡ ਦਿੱਤਾ ਗੁਰਮਤਾਲਾ ਜਪ ਤਪ ਸੰਜੁਗ ਤੇ ਆਲੂ ਦਿੱਤਾ ਕੋ ਜਪ ਤਾਲਾ ਸੰਜਮ ਸੁੱਕੇ ਦਿੱਤੀ ਕੀ ਤੁਕੜ ਕੀ ਹੁੰਦੀ ਆ ਪਰ ਲੋਕ ਵਾਸਤੇ ਕਰਤਾ ਜੋ ਤੁਕੜ ਕੀ ਹੁੰਦੀ ਐਥੇ ਬਾਤ ਐ ਜੋ ਕਰਤਾ ਉਹ ਕਰਤੋ ਦੀਏ ਉਹ ਕਰਤ ਨੂੰ ਕ ਕਹਿੰਦੇ ਨੇ ਇਹ ਵੀ ਛੋੜਨ ਦੇ ਕਰਤ ਕਰਮ ਕੇ ਵੀ ਛੁੜੇ ਆਇਆ ਲਾ ਜੀ ਤੁਕੜ ਤੇ ਛੱਡਿਆ ਲੱਗ ਗਿਆ ਕਰਮ ਕੇ ਵੀ ਤੁਹਾਨੂੰ ਜਦੋਂ ਚਲਤੀ ਕਹਿੰਦੇ ਕਿਰਤ ਕਰੋ ਨਾਮ ਜਪੋ ਵਾਦਿ ਛੋ। ਐਦਾਂ ਜਪਤ ਕਰੋ। ਜੀ। ਤੁਹਾਨੂੰ ਕਿ ਛੱਡੀ ਆ? ਹੂੰ। ਤਾਂ ਸੁਭਾਗ ਛੱਡੇ ਕਰਤ ਕੀ ਗਏ ਨੇ? ਸੁਪੇਰ ਕੇ। ਜੇ ਤੁਹਾਨੂੰ ਜਦੋਂ ਨੋਂ ਕਹਿੰਦੇ ਕਰਤੋ। ਕਰਤਾ ਕਰਕੇ ਵਿਛੜਿਆ ਉਹਦਾ ਛੋੜ ਨੈਲੀਏ ਛੜਦੀ। ਲਾਹ ਦੇਣਾ ਸ਼ੁਰੂ ਕੀਤਾ। ਹੂੰ ਕੀਰਤ ਕਰੋ। ਨਾਮ ਜਪੋ ਵੰਡ ਕੇ। ਉਹ ਲੱਗ ਚੀਜ਼ ਬਣਾਤੀ। ਪਹਲਾਉਂ। ਨਾਮ ਵੀ ਡੁਪਲੀਕੇਟ ਬਣਾਤਾ। ਵਾਲੀ ਜਮੋ ਹੋਇਆ। ਆਵਜੇ ਚਕਰਾ ਤਾਂ ਵੰਡ ਕੇ 10 ਵੰਡ ਸਾਨੂੰ ਦਿਓ। ਹਾਂ ਤੁਹਾਡੇ ਕੋਲ ਜੋ ਹੈਗਾ ਉਹਨੂੰ ਵੰਡ ਕੇ ਛੱਗੇ। ਆ ਸਾਨੂੰ ਦੇ ਦੋੰਦੇਲ ਗੋਗਾਰੇ ਪੈਨਨ ਤਾਂ ਸਾਡਾ ਡੋ ਗੁਰੂ ਵਾਲਾ ਫਿਰ ਕਹਾਂ ਆਪ ਸੋ ਸਾਜੀ ਹੂੰ ਵੱਡ ਕੇ ਤਾਂ ਵੰਡੋਂ ਕਰਨ ਗੁਰੂ ਵਾਲਾ ਨਿਕਲੂ ਹੈ ਸਾ ਹਾਂ ਬਿਲਕੁਲ ਜੀ ਬਿਲਕੁਲ ਆਪਕੇ ਖਾਣ ਦਾ ਤਾਂ ਕੱਢ ਦੋ ਕਹਿੰਦਾ ਬਾਅਦ ਦਫਾ ਹੋ ਗੋ ਆਪਕੇ ਪਿਆਰ ਦਾ ਫਾਲ ਪੂਰਾ ਨਿਕਲੂ ਨੋ ਜਿੱਦ ਜੰਮਦਾ ਤਾਂ ਉਹਦੇ ਹਿਸਾਬ ਨਾਲ ਪਿੱਛੇ ਚਾਹ ਚੌਕੜੀ ਸੰਮਤ ਆ ਜਾਵੇ ਉਹੀ ਗੱਲ ਉਹ ਸਾਨੂੰ ਮੰਨ ਲਓ ਦੋ ਰੋਲੇ ਲਾਉਣਾ ਹੈ ਨੂੰ ਵੀ ਦਾ ਆਪਣਾ ਦਿਖਾਓ ਯਾਰ ਆਏ ਹਾਂ ਜਲਦੀ ਹੈ ਵੀ ਆਨ ਬਿਲਕੁਲ ਜੀ ਕਲੀਅਰ ਹੋ ਰਹੀ ਹੈ ਕਹਾਣੀ ਸਾਰੀ ਹਮਨੇ ਉੱਪਰ ਲੋੜ ਫੜਉਂਦੇ ਰਹਿ ਨੇ ਬਿਲਕੁਲ ਫੜਉਂਦੇ ਰਹਿ ਰਾਮ ਨਾਮ ਨਾ ਅਰਧਿਆ ਰਾਮ ਜੀ ਅਰਾਧੀ ਦਾ ਰਾਮ ਲੋਕ ਪਹਿਲਾਂ ਜਪ ਤਪ ਸੰਜਮ ਛੋੜ ਉੱਥੇ ਤੁਸੀਂ ਜਪ ਛੱਡਤਾ ਇਹ ਕੀ ਹੋਇਆ ਤੁਸੀਂ ਜਪ ਛੱਡਦੇ ਫੇਰ ਅਰਾਧਨ ਸੀ ਤਾਂ ਉਹ ਤੇ ਬਾਅਦ ਇਹ ਤੇ ਪਹਿਲੇ ਲੋਰੇ ਕੋ ਦਿਖਾ ਨਾ ਵੀ ਰਾਜਨਗਰ ਸੱਜੇ ਇਹ ਲੋਰੀ ਜੱਪੇ ਕੇ ਜਪਤੇ ਗਾਹਾਂ ਦਾ ਕੁਝ ਹੈ ਨਹੀਂ ਸਖਾਂ ਕੋ ਨਾ ਜਪੋ ਰਾਜਨਗਰ ਫੇਲੀ ਰਾਦਰ ਹੈ ਨਹੀਂ ਹੰਝ ਮਹੀਦੀ ਤਾਂ ਨਹੀਂ ਅੱਲਾ ਜਾਪਾ ਤਾਪੋ ਸਜਮ ਆਰਾਧਨ ਤੇ ਖਤਮ ਜੀ ਸਤਨਾਮ ਦਾ ਮੈਂ ਖਤਮ ਉਹ ਤਾਂ ਪਹਿਲੇ ਹੀ ਸੇ ਗਿਆ ਉਹ ਕੋਈ ਜਪਨ ਤੱਕ ਨਹੀਂ ਵਿਚਾਰ ਤੱਕ ਨਹੀਂ ਸੁਣ ਤੱਕ ਇਸ ਵੀ ਉਹ ਵੀ ਪੰਜ ਵਾਲੀ ਦਾ ਪਾਠ ਪੜ੍ਹਨ ਤੱਕ ਇਸ ਵੀ ਤਰਸਦੀ ਲੋੜ ਕਾਦੀ ਸੀ ਲੋੜ ਕੋਲਾਰੇ ਉਂਦੇ ਦਸਵੰਦ ਦੇਣ ਦੀ ਵਲਣ ਚਕੋ ਦੀ ਗੱਲ ਬੇਰ ਵਲਣ ਚਕੋ ਦੀ ਗੱਲ ਜੀ ਕਰਤ ਕਰੋ ਦੀ ਗੱਲ ਬੇਰ ਕਰਤ ਕਰੋ ਵਲਣ ਚਕੋ ਜਦੋਂ ਜਪਤਾ ਨੌਣਾ ਵੀ ਜੋੜਿਆ ਹੈ ਜਦ ਤੇ ਬਾਤ ਤਾਪ ਹੈ ਫਿਰ ਸੱਜਣਾ ਤੇ ਰਾਜ ਨਾ ਉਹ ਤਾਂ ਆਪਣੇ ਕਰੂ ਇਹ ਧਰਮ ਦੇ ਉਪਦੇਸ਼ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਸੀ ਅੰਮ੍ਰਿਤਪੁਰ ਦੇ ਵਾਸਤੇ ਇੱਕ ਬਣੀ ਕੋਦਾਰੇ ਕੋਦਾਰੇ ਬਣਦੇ ਫੰਡ ਇਕੱਠਾ ਕਰਦੇ ਵਾਸਤੇ ਉਹੀ ਵਾਸਤੇ ਫਿਰ ਇਹਨਾਂ ਨੇ ਗੋਲੇ ਘੋਇਆ ਨੇ ਉਹਨਾਂ ਨੇ ਪੌੜੀ ਬਣਾਣੀ ਚਾਹਸਦੀ ਐਸੇ ਨਾਲ ਔਰ ਟਿਕੜੀ ਕਰਕੇ ਆਲਮਾ ਦਾ ਨੋਏ ਦੀ ਫਿਕਟ ਗੋਲੇ ਨਹੀਂ ਕਰਦਾ ਛੜਾਇਆ ਕਰ ਵੀ ਛੋਟੇ ਜਿਹੇ ਨਾ ਟਾਲਾ ਨਹੀਂ ਬਣਦਾ ਇੱਕ ਇੱਕ ਤੜਾ ਬਣ ਗਿਆ ਵਖਰਾ ਗੁਰੂ ਨੇ ਤੜਾ ਨੇ ਹੀ ਬਣਾਇਆ ਉਹ ਕਹਿੰਦਾ ਸਾਡਾ ਪਰਮੇਸ਼ਰ ਨਾਂ ਤਾਂ ਸੱਚਾ ਹੁੰਦਾ ਲੈ ਇਹ ਸਾਰਿਆਂ ਨੂੰ ਸੱਚ ਨਾਲ ਜੋੜਨਾ ਹੈ ਇਹਨਾਂ ਨੇ ਤੜਾ ਸਿੱਖਾਂ ਦਾ ਬਣਾ ਲਿਆ ਸਾਡਾ ਤਾਂ ਉਹ ਵੀ ਦੁਨੀਆ ਨੂੰ ਫਿਰ ਜਦੋਂ ਜਿੱਕੇ ਕੋਲੋਂ ਪੜਾ ਉਜੋਈ ਤਾਂ ਹੋਗੇ ਬਸੇ ਅੱਡੇ ਹੋ ਗਏ ਦੁਨੀਆਂ ਨਾਲ ਥੋੜੀ ਦੁਸ਼ਮਣੀ ਹੈ ਬੇਲੇ ਦੀ ਸਿੱਖੀ ਦਾ ਪ੍ਰਚਾਰ ਕਰਨ ਕਰੂੰ ਉਹ ਬੜੀ ਸਾਡਾ ਉਹ ਆਈਡੀਆ ਹੀ ਦੀ ਸਾਡਾ ਟਾਰਗੇਟ ਹੈ ਦੀ ਉਹ ਨਾ ਹੁਣ ਮੁਗਲੀਆਂ ਫਿਰ ਅਸੀਂ ਦੰਡੇ ਦੇ ਜੋਰ ਨਾਲ ਹੋ ਜਾਂਦੇ ਜੋਰ ਨਾਲ ਇਹਨਾਂ ਨੂੰ ਗੁਲਾਮ ਬਣਾ ਲਾਂਗੇ ਸਿੱਖੀ ਐ ਰਾਜਵੰਦਨੀ ਤਰ੍ਹਾਂ ਚਲੇਗਾ ਜਦੋਂ ਰਾਜ ਹੋ ਜੂ ਫਿਰ ਜ਼ਬਰਦਸਤ ਫਿਰ ਉੱਠ ਕੇ ਬਣਾ ਲਾਂਗੇ ਜੀ ਜੀ ਜਿਵੇਂ ਬੁੱਧੂ ਬਣਾਨੇ ਕੀ ਤਬ ਬੁੱਧੂ ਮੇਰੇ ਦਾਦੀ ਕੀਤਾ ਤਾਂ ਕੋਈ ਵੀ ਕਰ ਸਕਿਆ ਕਾਈ ਤੋਂ ਥੋੜੀ ਬਾਤੀ ਕਹ ਦੀ ਜਦੂ ਦੀਏ ਚ ਇਹ ਕਦੇ ਬਣਾ ਲਵਾਂਗੇ ਸੋ ਸਿੱਖ ਤਾਂ ਕੋਈ ਆਪ ਇਹਦੀ ਸਿੱਖੀ ਦੀ ਗੱਲ ਕਰਦੇ ਇੱਕ ਤਾਂ ਆਪ ਇਹਦੀ ਆਪ ਬੜੇ ਦੀ ਕਿਸੇ ਨੂੰ ਮਾਰਾਂ ਉਹਛ ਕਾਮ ਕਾਲ ਮਤ ਲੱਗੀ ਉੱਠਿਆ ਕਾਮ ਇੱਛਾ ਚੜੀਆਂ ਤੇ ਰਹਿਣਾ ਤੀਰ ਰਹੇ ਘਟ ਪੀਤਰ ਇਛਾ ਇਹ ਨਿਆ ਪੈਦਾ ਹੋ ਗਈ ਉਹ ਉੱਠਿਆ ਅਗਰ ਉੱਠੇ ਗਏ ਅੰਦਰ ਸਾਗਰ ਜਦ ਉੱਠੇ ਤਦ ਤਰਨ ਦਹੇਲਾ ਕਲਮਾ ਦੇਖੀ ਉਹ ਬੇਤਾਲੀ ਨਹੀਂ ਆਇਆ ਪੈਦਾ ਹੋਈ ਇਛਾ ਮਾਰਾ ਇਤਫਾਨ ਆ ਗਿਆ ਅੰਦਰ ਲੋੜੇ ਨੀਅ ਦੇ ਤੂਫਾਨ ਆਇਆ ਪਿਆਰਾ ਆਮ ਨਵਰੀ ਨੀਅ ਦੇ ਤੂਫਾਨ ਆਇਆ ਪਿਆਰਾ ਅਰਵਤ ਕਹਤੇ ਹੂੰ ਉੱਛਲਿਆ ਖਾਮ ਤਾਲ ਮਤ ਲੱਗੀ ਤਾਲ ਮਤ ਜਾਗੀ ਲੱਗੀ ਜਾਗੀ ਹੋਣਾ ਲਾਜੀ ਦੀ ਅਜੀ ਕੀ ਜਾਗੀ ਹੈ ਬੋਤ ਆ ਤਾਂ ਸੋਈ ਜਾਗਦੀ ਹੈ ਕਾਲ ਮੋਤ ਜਾਗਿਆ ਹੀ ਦੂਈ ਸੌਂਬੀ ਦੂਈ ਜਾਗੂ ਨੀ ਐਨ ਵਾਲੂ ਨੀ ਹਾਲ ਜਾਗੀ ਹੈ ਕਿ ਕਾਲ ਕਾਲ ਵਾਲੀ ਮਤ ਦੇ ਮਗਰ ਲੱਗ ਗਿਆ ਇਹ ਨਹੀਂ ਹੋ ਸਕਦਾ ਜੀ ਨਹੀਂ ਕਾਲ ਮੋਤ ਜਾਗਿਆ ਜਦ ਮਨਮਤੀ ਆਗ ਕਾਲ ਮਤ ਬਨ ਮਤ ਹੁੰਦੀ ਹੈ ਬੁੱਧੀ ਮਤ ਮਨ ਕਾ ਬੋਲ त्यागो ਕਾਲ ਆ ਇਹ ਮਨਮਤੀ ਆਗ ਪੀ ਪੈਦਾ ਹੋਈ ਤੋ ਆਨ ਸ਼ਕਤੀ ਗੱਲ ਬੰਧਿਆ ਪਰ ਫਿਰ ਹੋਰ ਇਹ ਜੁੜਣੀ ਨਹੀਂ ਆਦੇ ਵਿਆਹ ਹੋ ਜਾਏ ਬਰਨ ਆਸ਼ਰਮ ਲੁਕੋ ਆਪਣੀ ਹੋਂਣੇ ਵੀ ਇਹਦਾ ਵਿਆਹ ਕਰਤਾ ਗੱਲ ਗਲਤ ਹੈ ਓਏ ਮਾਤਮਾ ਕੋਲੋਂ ਬੰਦ ਸ਼ਕਤੀ ਕਰਾ ਮਾਤਾਣੀ ਸ਼ਕਤੀ ਪਰਬਤ ਦੀ ਸ਼ਕਤੀ ਹੈ ਜਿਹੜੀ ਉਹ ਹੋਰ ਹੈ ਯਾਨੀ ਗੁਰਮਤਿ ਜਿਹੜੀ ਸ਼ਕਤੀ ਹੈ ਇੱਛਾ ਸ਼ਕਤੀ ਹੁੰਦੀ ਹੈ ਨਾ ਇੱਛਾ ਹੋਰ ਹੈ ਇੱਛਾ ਸ਼ਕਤੀ ਜਿਹਨੋਂ ਵੱਧ ਗਿਆ ਤਨ ਉਵੜੂ ਤਨ ਉਵੜੂ ਤਨ ਉਵੜੂ ਤਨ ਗੋਗੜੂ ਸ਼ਕਤੀ ਜਦ ਹੀ ਧਰਮ ਦੀ ਸ਼ਕਤੀ ਹੁੰਦੀ ਹੈ ਜਿਵੇਂ ਜਿਵੇਂ ਛੱਤੀ ਹੈ ਉਥੇ ਉਹਦੀ ਰਾਜ ਨੂੰ ਅੰਦਰੋਂ ਉਹਨਾਂ ਜੋ ਤੋਂ ਬਾਦ ਬਣ ਜੂਏ ਬਣ ਜੂਏ ਉਹ ਸ਼ਕਤੀਆਂ ਨੇ ਕੋਈ ਜ਼ਰੂਰ ਕੋਈ ਮੁਸਲਮਾਨਾਂ ਦੀ ਜਿਹੜੀ ਮੰਨਦਾ ਹੈ ਹੱਦ ਮੰਤ ਵੀ ਸ਼ਕਤੀ ਹੈ ਕੋਲ ਸ਼ਕਤੀ ਦੇ ਵਿੱਚ ਨਾਲ ਜੋਰ ਬਣਦਾ ਹੈ। ਸਾਬ ਜਿਹੜਾ ਗੁਰੂ ਆ ਪਰਮੇਸ਼ਰ ਦੀ ਸ਼ਕਤੀ ਤੋਂ ਛੱਡ ਕੇ ਤੇਤੀ ਗ੍ਰਹਣ ਦੇਵੀ ਦੇਵਤਿਆਂ ਨੇ ਕਿਸੇ ਹੋਰ ਸ਼ਕਤੀ ਨੂੰ ਜੋਰ ਤੋਂ ਦੇਵੀ ਦੇਵਤਾਂ ਨੂੰ ਜੋਰ। ਹਰ ਮਾਤੇ ਦੀ ਸ਼ਕਤੀ ਹੈ। ਗੋਦਵੰਦ ਦੀ ਜਿਹੜੀ ਸ਼ਕਤੀ ਹੈ। ਸੱਚ ਦੀ ਸ਼ਕਤੀ ਨੂੰ ਅੰਤ ਨਹੀਂ ਜਾਈ। ਵੀ ਜਿਹੜੀ ਸ਼ਕਤੀ ਦਾ ਜੋਰ। ਉੱਠੇ ਬਾਤਨ ਦਾ ਜੋਰ। ਉਹ ਗਲਜਰਾ ਸਾਪਾਤ ਪਰ ਉਹ ਕੰਡੀ ਤੇਜ ਪਰ ਮੁਖ ਜੋਹੀ ਸਰ ਅਪਸਰ ਨਾ ਪਛਾਣਿਆ ਸਾਰਾ ਅਪਸਰ ਦੀ ਪਛਾਣਿਆ ਜਿਹੜਾ ਅਪਸਰ ਉਹਨਾਂ ਦਾ ਅਪਸਰ ਇੱਕ ਤਾਂ ਸਾਰਾ ਸਰੋਵਰ ਉਹਨਾਂ ਤਾਰ। ਇਹ ਤੋੜਨਾ ਅਗਨ ਸਾਗਰ। ਤੇ ਕਬ੍ਰਤ ਸਰੋਵਰ ਦੋਨੇ। ਕਬ੍ਰਤ ਸਰੋਵਰ ਛੱਡ ਕੇ ਉਹ ਅਗਨ ਸਾਗਰ ਤੇ ਵੱਧ ਗਿਆ। ਮਾਇਆ ਦੇ ਸਾਕਰ ਤੇ ਅਗਨ ਖੇਲੇ ਲੱਗ ਗਿਆ। ਰਾਤ ਦਾ ਕੁਛ ਬੜੇ ਨੂੰ ਫੋਨ ਨੂੰ ਆਪੇ ਜਲ ਗਿਆ ਆਪੇ ਨਾਲਾਈ ਕੁਛ ਬੜੇ ਜਲ ਜਾਂਦੇ ਟੋਲਾ ਉਹ ਮਾਨਨ ਚਰਾਤੀ ਬਲ ਜਾ ਗਿਆ ਰਾਤ ਪੋਜੀ ਚਾਤਾਲ ਜਿ ਜਾ ਗਿਆ ਬਸ ਉਹ ਖਾ ਲਿਆ ਫਿਰ ਉਹਦੀ ਯਾਦੀ ਉਹ ਤੰਤਰਾ ਪੌਦਾ ਮਾਂ ਭਾਈ ਨੇ ਤੰਤਰਾ ਫਲ ਉਹ ਖਾ ਲਿਆ ਆਦਮ ਤੇ ਹਵਾਨੂ ਆ ਅਦ੍ਰੋ ਜਾਗਿਆ ਯਾ ਹੋ ਗਏ ਖਿਆਲ ਪੈਦਾ ਹੋ ਜਾਗ ਗਿਆ ਇਹ ਖਿਆਲ ਮਨਿ ਤੇਜ ਪਰ ਤ੍ਰਿਯ ਮੁਖ ਜੋਹੀ ਤਰुण ਤੇਜ ਜਵਾਨੀ ਦਾ ਤੇਜ ਪਾਤਰੀ ਜਿਵੇਂ ਤਰੁਣ ਤੇਜ ਦੂਜੀ ਔਰ ਮੁਖ ਪਾਤਰੀ ਆ ਦਾ ਭੁਖਾ ਜਿਵੇਂ ਦੂਜੀ ਅਮ ਤਮਰ ਚੱਕਣ ਲੱਗਿਆ ਕਟਿਆ ਕਟੀਆਂ ਮੱਤਾਂ ਵੱਲ ਤੈਨੂੰ ਚਲਿਆ ਗਿਆ ਬਰਮਤ ਛੱਡਤੀ ਅਜਲੀ ਬਨਵਤਾਂ ਨੇ ਦਟਿਆਂ ਚਲਿਆ ਗਿਆ ਅੰਦਰ ਅੰਦਰ ਆਤਮਾ ਦੀ ਆਵਾਜ਼ ਛੱਡਤੀ ਜਿਹੜਾ ਅਮਰਤ ਫਦੇ ਹੀ ਵਰਸਦਾ ਸੀ ਉਹ ਜਿਹੜਾ ਉਛੜਦਾ ਬਾਹਰ ਦੇ ਪੱਤਾ ਮਲਤਿਆਂ ਚ ਲੈ ਗਿਆ ਪਰ ਤਰੀਆ ਬਾਹਰ ਦੀ ਕੋਤਾ ਨੇ ਦੇਖਣ ਆ ਗਿਆ ਇਹਨਾਂ ਚੋ ਕਿਹੜੀ ਮਤ ਧਾਰਨ ਕਰਾਂ ਜਿਹੜੇ ਸੰਤਵਾਲਦਾ ਉਹਨੂੰ ਗਿਆਨ ਫਿੱਟ ਹੋ ਗਿਆ ਜਿਹੜੇ ਸੰਤਵਾਲਦਾ ਗਲਤ ਜਿਹਨਾਂ ਨਾਲ ਲੱਗਿਆ ਉਹਦਾ ਮੰਨ ਲਿਆ ਜਿਹੜੀ ਮਰਜ਼ੀ ਪਸੰਦ ਆਈ ਢਾਲਣ ਕਰ ਲਈ ਜਿਹੜੀ ਤੇਰੀ ਆ ਪਸੰਦ ਆਈ ਉਹਦੀ ਸੰਭਤ ਕਰ ਲਈ ਜਿਹੜੀ ਮਰਜ਼ੀ ਪਸੰਦ ਆਈ ਉਹਦੀ ਸੰਦ ਦੇ ਦੇਖਿਆ ਉੱਥੇ ਅਮਰਤ ਵਸਦਾ ਐ ਅੱਗ ਵਰਸਦੀ ਐ ਇਹਦੀ ਦੇਖਿਆ ਵੀ ਗੱਲ ਮਾਇਆ ਦੀ ਕਰ ਰਹੇ ਨੇ ਮਾਇਆ ਦੀ ਵਡਿਆਈ ਐ ਆ ਨਾਵਦੀ ਵੀੜੀ ਉੱਥੇ ਇਹ ਦੀ ਸਮਝ ਆਥੇ ਕਿ ਉੱਥੇ ਅਮਰਤਲ ਵਣਦੇ ਨੇ ਇਹ ਅਗ ਵਰਣਦੇ ਨੇ ਉਹ ਬਰੋਦੇ ਨੂੰ ਹੁੰਦੇ ਗੈਰ ਵਿਖਣਦੇ ਵਿਖਿਆ ਦੀ ਗੱਲ ਹੈ ਸਰ ਅਫਸਰ ਮਤਲਬ ਫਰਜ਼ ਅਫਸਰ ਉਲਟਾ ਅਗਨਸਾਕਰ ਅਮਰਤ ਸੰਕਰ ਅਗਨਸਾ ਉੱਥੇ ਅਗਨਸਾਕਰ ਦੀ ਗੱਲ ਆ ਮਾਇਆ ਗੋਦਾਰੇ ਅਗਨਸਾਕਰ ਹੈ ਵਿਦ੍ਹਾ ਗੱਲ ਅਸੰਦਤਾ ਉਥੇ ਮਾਇਆ ਦੀ ਗੱਲ ਹੈ ਉਥੇ ਮਾਇਆ ਦੀ ਕੌਣ ਬੜਾ ਮਾਇਆ ਵੜਿਆਈ ਜਿੱਦੇ ਮਾਇਆ ਵੜਿਆਈ ਆਪ ਸਾਰਾ ਉਥੇ ਸਾਰੇ ਜਿੱਤੇ ਹਾਲੇਵਲ ਆਈ ਦੀ ਗੱਲ ਆ ਸਾਰਾ ਜਿੱਤੇ ਹਾਲੇਵਲ ਆਇਆ ਉਹ ਸਾਰਾ ਜਿੱਤੇ ਮਾਇਆ ਵੜਿਆਈ ਆਪ ਸਾਰਾ ਉਨਮਨ ਮਤ ਕਾਮ ਮਹਾ ਬਿਖ ਭੁੱਲੇੁਰ ਮਰਤਾ ਉਹਦੀ ਉਲਟੀ ਬਰਤਾਉਗੀ ਉਲਮਨ ਨਹੀਂ ਬਜਾਇ ਉਲਮਤ ਹੋ ਗਈ ਮਨ ਆਇਆ ਤਾਂ ਜਾ ਪੁਠਾ ਹੁੰਦਾ ਤੇ ਉਲਮਨ ਹੋ ਜਾਂਦਾ ਹੈ ਜਾਂ ਮੱਤ ਪੁੱਠੀ ਹੁੰਦੀ ਹੈ ਤੇ ਉਲਮਤ ਹੋ ਜਾਂਦਾ ਆ ਉਲਮਤ ਹੋ ਪੁੱਠੀ ਮਾਸ ਲੈ ਲਈ ਪਤਰਿਆਨਨ ਜੁੜ ਗਿਆ ਪੁੱਠੀ ਮਾਸ ਲੈ ਲਈ ਉਹਦਾ ਪੁੱਠੀ ਮਾਸ ਦਊ ਆਪਣੇ ਪਰਿਵਾਰ ਨੂੰ ਤੋੜੂਗੀ ਉਹੋ ਉਹਦਾ ਆਪਣਾ ਪਰਿਵਾਰ ਪਤਰੀ ਆਉਦੇ ਪਰਿਵਾਰ ਸਹੀ ਜਿਹੜਾ ਉਹਦਾ ਪਰਿਵਾਰ ਹੈ ਸੱਚ ਹੱਣ ਨਾਲੇ ਜਿਹਨੂੰ ਕਹਿਆ ਸਭ ਪਰਿਵਾਰ ਚੜਾਇਆ ਵੇੜੇ ਜਦ ਸਰੀ ਚੱਲਦੇ ਨੇ ਉਹਨੂੰ ਮਤ ਲੈ ਲਈ ਉਹਨੂੰ ਮਤ ਹੋ ਗਈ ਤਾਂ ਪਰਿਵਾਰ ਛੱਡਤਾ ਆਪਣਾ ਫਿਰ ਆਪਣੂ ਨਹੀਂ ਪਾਇਆ ਆਪਣੇ ਨੂੰ ਨਹੀਂ ਚੰਗਾ ਲੱਗਿਆ ਬਾਕੀ ਕੋ ਆਪਣੀ ਕਹੇ ਦੂਜੇ ਦੀ ਮਤ ਨੂੰ ਆਪਣੀ ਕਰਨ ਲੱਗਿਆ ਕਤਰੀਆਂ ਨੂੰ ਆਪਣੀ ਬਣਾ ਲਿਆ ਜਦ ਫਿਰ ਆਪਣੇ ਨੇ ਤਿਆਗਤਾ ਸੱਚਖੰਡ ਵਾਲਿਆਂ ਨੇ ਤਿਆਗਤਾ ਪਾਪ ਪੁੰਨ ਪਛਾਣਿਆ ਪਾਪ ਨੂੰ ਪਛਾਣ ਦੀ ਗੱਲ ਇਹਦਾ ਉਹਦਾ ਪਾਪ ਉਹ ਜਿਹੜਾ ਪ੍ਰਚਾਰਿਆ ਜਾਂਦਾ ਸੰਸਾਰ ਚੋਂ ਪਾਪ ਨਹੀਂ ਬਣਦੀ ਗੁਰਬਾਣੀ ਪਾਪ ਨੂੰ کئی ਪ੍ਰਕਾਰ ਦਾ ਅਸਲੀ ਕੁਝ ਹੋਰ ਹੈ ਨਾ ਕਿ ਨਹੀਂ ਕਿਈ ਪਾਪ ਹੋਣ ਦਾ ਬਹੁ ਪ੍ਰਕਾਰ ਆਇਤੇ ਪਾਪਰ ਵੀ ਬਹੁਤ ਜਾਂ ਦੜ ਵੀ ਬਹੁਤ ਆਇਆ ਜਿਵੇਂ ਸੋਵੜ ਜਾਂ ਟਣ ਬਹੁ ਪ੍ਰਕਾਰ ਆ ਪਾਪਰ ਵੀ ਬਹੁਤ ਆਇਆ ਹੋਰੰ ਦਾ ਸੰثار ਹੈ ਮੋਰੀ ਦੀ ਮਾਇਆ ਪਾਪਨ ਦੀ ਪਛਾਣ ਨਹੀਂ ਕੀਤੀ ਤਾਂ ਪਨ ਕੀ ਹੈ ਆਪਣੇ ਵਿੱਚ ਨਾ ਪੁੱਨ ਪੁੱਨ ਕਰਮ ਪਾਣੇ ਚੱਲੂ ਪਨ ਕਰਮੇ ਕਰੂ ਆਪਣੇ ਪਾਣੇ ਚੱਲੂ ਪਾਪ ਕਰਮ ਕਰੂ ਇਹਦੀ ਪਛਾਣ ਨਹੀਂ ਕੀਤੀ ਉਹ ਆਪਣੇ ਪਾਣੀ ਚੱਲਦਾ ਆਪਣੀ ਮੱਤ ਆਪਣੀ ਮਨਜੀ ਦੀ ਮੱਤ ਲੈ ਲਈ ਉੱਥੇ ਬੰ ਅਜ਼ਾਦ ਹੋ ਗਿਆ ਪਾਪੀ ਹੋ ਗਿਆ ਪਾਪੀ ਜਿਹੜਾ ਕੀ ਕਰਦਾ ਲੋਭ ਕਰਦਾ ਹੈ ਜੇ ਲੋਕਾਸਤਾ ਜਿਹੜਾ ਪਾਪੀ ਹੈ ਫਿਰ ਪਾਪ ਕਰਦਾ ਜਾਂ ਝੂਠ ਹੈ ਪਾਪ ਝੂਠ ਦੇ ਉਲਟੀ ਵਾਸਤੇ ਲੈ ਲੀ ਪਾਪ ਹੈ ਪਾਪ ਉਲਟੀ ਮਾਤ ਵਿੱਚ ਪਾਪ ਹੈ ਹੁੰਦਾ ਪਰ ਹੁੰਦਾ ਹੀ ਨਹੀਂ ਜਿਹਨੂੰ ਪੁੱਤ ਕਹਿੰਦੇ ਨੇ ਉਹ ਜਿਹਨੂੰ ਦਾਤ ਕਹਿੰਦੇ ਨੇ ਦੀ ਪਛਾਣ ਖਤਮ ਹੋ ਗਈ ਤੇ ਦੁਆਲਾ ਪਾਪ ਪਰਮੰਦਰ ਨੂੰ ਸੇਖ ਗੁਰਬਾਣੀ ਦੀ ਗੁਰਬਾਣੀ ਦੀ ਮੰਦੀ ਪਾਪ ਦੀ ਪਛਾਣ ਕਰ ਦਿੱਤੀ ਉਹਦਾ ਪਛਾਣ ਹੀ ਰਹੀ ਬਾਬਰ ਨਾਲ ਹੀ ਲੈ ਲਿਆ ਕਾਹੇ ਰਲ ਮਨਾ ਲਿਆ ਸੁਤ ਸੰਪਤੀ ਦੇਖ ਇਹ ਮਨ ਗਰਬਿਆ ਅਸੁਤ ਸੰਪਤੀ ਤੇਰਾ ਨੂੰ ਦੇਖ ਕੇ ਹੰਕਾਰ ਹੋ ਗਿਆ ਮਰੈਦ ਮੁੰਡੇ ਨੇ ਲਾਣਾ ਚੱਲਦਾ ਕਬ ਸੰਪਤੀ ਨੂੰ ਦੇਖ ਕੇ ਮਨ ਗਰਬਾ ਲਾ ਗਿਆ ਵਿਰਾਮ ਜਿਵੇਂ ਕੁਛ ਜੋ ਕੁਛ ਹੈ ਸੋ ਤੇਰਾ ਇਹ ਭੁੱਲ ਦਿਆ ਇਹ ਵਿਸਾਰਤਾ ਉਲਟੀ ਮਤ ਲੈ ਲਈ ਜੋ ਕੁਛ ਹੈ ਸੋ ਤੇਰਾ ਇਹ ਭੁੱਲ ਗਿਆ ਵਸਾਤਾ ਦੂਜੀ ਜੜੀ ਵਸਤਾ ਪਤریہ ਉਹ ਨਹੀਂ ਕਹਤਾ ਤੇਰਾ ਹੈ ਸਭ ਕੁਝ ਤੇ ਵੀ ਤੇਰੇ ਪਰਿਵਾਰ ਵੀ ਤੇਰਾ ਸੰਪਤੀ ਵੀ ਤੇਰੀ ਹੈ ਕਲ ਪੱਕੀ ਹੋ ਗਈ ਗੰਢ ਪੱਕੀ ਹੋ ਗਈ ਸੰਸਾਰ ਕੁੱਤੀ ਗੰਢ ਭਵੇ ਸੰਸਾਰ ਸੁਧਾਰਨ ਗੱਲ ਜੋੜੀ ਆਪਣੇ ਹੁਣ ਆਦੇ ਹਾਂਜੀ RAM ਰਿਦੈ ਟਿਕ ਹੋਇਆ ਹਰਦੇ ਵਾਲਾ ਰਾਲ ਛੜਤਾ ਯੁਧੇ ਵਾਲਾ ਰੋਲ ਲਿਆ ਫਿਰਦੇ ਵਾਲਾ ਜਿਹੜਾ ਹੰਦਾ ਰਾਮ ਖੋ ਗਿਆ ਉਹ ਭੁੱਲ ਗਿਆ ਯੁਧੇ ਵਾਲਾ ਫੜ ਲਿਆ ਆਪਣਾਤਾ ਲੱਕੜੀ ਨਾਲ ਫੜਾਤਾ ਯੁਧੇ ਵਾਲਾ ਰਿਦੈ ਵਾਲਾ ਖੋ ਗਿਆ ਉਹਦਾ ਕਬੀਰ ਕਹਿੰਦਾ ਸਭੇ ਘਾਟਾ ਬੋਲਦੇ ਉਹਦਾ ਦੋਛੇ ਹੀ ਗਏ ਸਨ ਹृदय ਤੇ ਰੰਗ ਹੋਇਆ ਗਿਆ ਅਵਰ ਮਰਤ ਮਾਇਆ ਮਨ ਤੋਲੀ ਜੇ ਕੋ ਹੋਰ ਮਰਦਾ ਉਹਨ ਬਾਯਾ ਨਾਲ ਤੁਲਨਾ ਕਰਦਾ ਹੈ ਉਹਨੇ ਕੀ ਕਮਾਇਆ ਕੀ ਖਟਿਆ ਸੀ ਕਿੱਡਾ ਵੱਡਾ ਆਦਮੀ ਸੀ ਕਿੰਨੀ ਇੱਜ਼ਤ ਕਮਾਈ ਉਹਨੇ ਕਿੰਨਾ ਬੁੱਢੇ ਨੂੰ ਕੇ ਜਾਇਦਾਦ ਬਣਾ ਗਿਆ ਕੋਠੀਆਂ ਬਣਾ ਗਿਆ ਉਹਦੇ ਨਾਲ ਤੋਲਦਾ ਉਹਦੀ ਬੜਿਆਈ ਨੂੰ ਮਾਇਆ ਲੱਗ ਤਰਨ ਬੜਾ ਮਾਇਆ ਬੜਿਆਈ ਮਾਇਆ ਨਾਲ ਤੋਲਦਾ ਹਾਂਜੀ ਤੋ ਭਗ ਮੁਖ ਜਨਮ ਵਿਗੋਇਆ ਬਸ ਤੇ ਇਹਦਾ ਫਲਵਾਇਆ ਭਗ ਮੁਖਿਆ ਜਮਣ ਮੰਨ ਕੇ ਜੈ ਭਗੁ तेरा भी जणू खत्म हां जे तू माया रो बड़याई माया माया दी, मा दी कारोबार तेरा भी गया जणू ग्वाला हीरे जैसा चलवे कौंडी बदन रे ग्वाला हां जी पुंदर केस कुसुम ते ਸਪਤਪਤਾਲ ਕੀ ਬਾਣੀ ਕੇਸ ਚਿੱਟੇ ਹੋ ਗਏ ਆ ਨਰੇ ਫੋਲੋ ਨਰੇ ਕੰਗਲ ਦੇ ਉਹ ਤੋਂ ਵੀ ਚਿੱਟੇ ਹੋੜੇ ਬੋਲ ਨਿਕਲਦਾ ਹੀ ਨਹੀਂ ਅੰਦਰੋਂ ਅੰਦਰੋਂ ਆਵਾਜ਼ ਬੂਜੋ ਆਵਾਜ਼ੇ ਨਹੀਂ ਦਿਖਦੀ ਅੰਦਰ ਹੈ ਬੋਲਣ ਵਾਲੀ ਗੱਲ ਪਰ ਬੂਜੋ ਇਡੀ ਸ਼ਕਤੀ ਦੇ ਕੇ ਬੂਜੋ ਦੂਏ ਦੂਸਰਣਾ ਸਕਤੇ ਬੋਲ ਕੇ ਸੁਣਾਉਣ ਵਾਲੀ ਸ਼ਕਤੀ ਗਈ ਤਪ ਤਪ ਤਾਲ ਕੀ ਬਾਣੀ ਹੋਊ ਬੂਰੂ ਕੰਨ ਲਾ ਕੇ ਸੁਣੀਏ ਤਾਂ ਵਾ ਸੁਣਦੀ ਹੈ ਆਵਾਜ਼ ਨਹੀਂ ਨਿਕਲਦੀ ਬੂਝੋ ਪਤਾ ਕੀ ਹੋ ਗਿਆ ਤਪ ਤਪ ਕੀ ਬਾਣੀ ਸਤ ਤਪ ਤਾਲ ਤੋਂ ਬਾਣੀ ਹੈ ਉਹ ਹੀ ਰਹੇਗੀ ਪਰ ਆਵਾਜ਼ ਨਹੀਂ ਪ੍ਰਗਟ ਨਹੀਂ ਕਰ ਸਕਦਾ ਇਹ ਦੇਤਾ ਹੈ ਆਵਾਜ਼ ਕਹਿ ਲੂ ਬਹੁਤ ਕੁਝ ਹੈ ਉਹ ਜੋ ਕਰਨ ਦੀ ਸਮਰੱਥਾ ਦੀ ਹੈ ਛੱਤੀ ਵੀ ਬੋਲ ਕੇ ਦਲਕਲ ਬਿਸਮੂਰਦੀ ਛੱਤੀ ਖਤਮ ਹੋ ਗਈ ਆਵਾਜ਼ ਜਿਹੜੀ ਗੜਕਵੀ ਸੀ ਉਹ ਖਤਮ ਕਿਉਂ ਪਤਾ ਵੀ ਜਲ ਮੁਚਲੇ ਗਿਆ ਪਰ ਲੋਕ ਦੀ ਚਿੰਤਾ ਹੈ ਕੇ ਕੀ ਹੋਊਗਾ ਅੰਦਰ ਵੱਲ ਵੱਲ ਚਿੰਤਾ ਖਾਦੀ ਹੈ ਪਰ ਬਾਹਰ ਮਾਇਆ ਦੇ ਹੰਕਾਰ ਤੇ ਜੋਗਾ ਪਰਵਾਰ ਨੂੰ ਦੇਖ ਕੇ ਕੋਠੀਆਂ ਨੂੰ ਦੇਖ ਕੇ ਜੋ ਹੌਸਲਾ ਕਰਦਾ ਅੰਦਰੋਂ ਦੀ ਹੈ ਅੰਦਰੋਂ ਉਹ ਨਿਕਲਦਾ ਹੀ ਨਹੀਂ ਡਰਦਾ ਦਾ ਬੋਲ ਜਿਹੜਾ ਜਾਂ ਪੈ ਵੀ ਜੋ ਹੁਣ ਬੋਲ ਹੁਣ ਬੋਲ ਕੇ ਨਹੀਂ ਨਿਕਲਦਾ ਫੇੜੀ ਬੋਲ ਨਿਕਲਦਾ लोचन धर्महि बुद्ध बननाथ आंखਾਂ ਵੀ ਜੜੀਆਂ ਨੇ ਕੋਈ ਅੱਖਾਂ ਦੇ ਵਿੱਚ ਪਲਕਾਂ ਦੇ ਵਿੱਚ ਵੀ ਜੜੀ ਆ ਨਾ ਚਮਕਣ ਦੀ ਸ਼ਕਤੀ ਵੀ ਪਲਕਾਂ ਵੀ ਚਲਣ ਤੇ ਜਵਾਬ ਦਿੰਦੀਆਂ ਜਾਂਦੀਆਂ ਨੇ ਕੱਤੇ ਸੂਖਸ਼ਮ ਪਲਕ ਹੁੰਦੀ ਹੈ ਤਦ ਤੋਂ ਘਟ ਸ਼ਕਤੀ ਪਲਕ ਨੂੰ ਲੱਗਦੀ ਹੈ ਚਪਕਾਉਣ ਨੂੰ ਇਹ ਤਾਂ भी ਚੱਕੜੀਆਂ ਜਿਹੜੀਆਂ ਅੰਨ ਅੱਖਾਂ ਉਹ ਵੀ ਆਕਸੀਆਉਂਦੀਆਂ ਸ਼ਕਤੀ ਦੇ ਲਈ ਦੇਜ ਖਿਤੇ ਆ ਗਰਸਾਉ ਫੈਵਰੀਟ ਇਸ ਜੀਤ ਕਰਤਾ ਫੈਵਰੀਟ ਹਾਂਜੀ ਬੱਬਾ ਜੀ ਸੱਤਾ ਸੱਤੇ ਦੇ ਪੈਰ ਚ ਦਾਰਾ ਮਮਾ ਹਾਹੇ ਨੂੰ ਧਿਆਰੀ ਰਮੇ ਰਮੇ ਲੋਚਨ ਸ਼ਰਮ ਅੱਖਾਂ ਕੇ ਪਾਣੀ ਦਿਤਦਾ ਅੱਖਾਂ ਜੋ ਪਾਣੀ ਦੇ ਤਰ੍ਹਾਂ ਹਰ ਵਕਤ ਬੁੱਧ ਬਲ ਨਾਕੀ ਬੁੱਧੀ ਦੇ ਬੁੱਧ ਬਲ ਸਿੱਖ ਤੇ ਵਿਚਾਰ ਰਹਿਿਆ ਹੀ ਨਹੀਂ ਅੰਦਰ ਵਿਚਾਰ ਤਾਂ ਪਹਿਲਾਂ ਹੀ ਦੇ ਛੱਡਿਆ ਹੋਇਆ ਤਿਆਗਿਆ ਹੋਇਆ ਬੁੱਧੀ ਦਾ ਬਲ ਗਿਆ ਖਤਮ ਉਹ ਵਾਤਹੀਲ ਹੋ ਗਿਆ ਸਤਰਾ ਨਾ ਵਾਤਹੀਲ ਅਥੀਆ ਕਾ ਵਿਹਾਰ ਲਲਪਾਵਾ ਉਹ ਤਾਂ ਸ਼ਾਹ ਹੋ ਗਈ ਸੱਤਾ ਲਈ ਮਾਤਹੀਨ ਹੋ ਗਿਆ ਉਹ ਤਾਂ ਬਲਣਾ ਠੀਕ ਉਹਦੇ ਗਿਆਜ ਖਤ ਕੀਤੀ ਨਾ ਦੂਏ ਪਾਸੇ ਮਾਇਆ ਹੀ ਤਾਂ ਖੀਤੀ ਉਹਦੀ ਅਖਰ ਦੀ ਮਾਇਆ ਹੈ ਤਾਂ ਮਾਇਆ ਅਗ ਕਿਰਤ ਤਾਂ ਰਿਹਾ ਵਿਵੇਕ ਤਾਂ ਹੀਨ ਹੋ ਗਿਆ ਵਿਵੇਕ ਹੀ ਤਾਂ ਦੇ ਕਮ ਵਿਵੇਕ ਵਾਲੇ ਰਾਤ ਚਲੇ ਹੀ ਗਏ ਵਿਵੇਕ ਵਾਲੇ ਰਾਹੇ ਚੱਲਿਆ ਹੁੰਦਾ ਪਹਿਲਾਂ ਤਾਂ ਫਿਰ ਉਹ ਜਦੋਂ ਸਾਰਾ ਹੈ ਵਿਵੇਕ ਤਾਂ ਕੰਮ ਕਰਦਾ ਫਿਰ ਜਿਹੜੀ ਚੀਜ਼ ਆਪਾਂ ਵਰਤੀਏ ਹੈ ਤਾਂ ਜਾਮ ਹੋ ਗਿਆ ਉਹ ਪਾਵਰ ਸਿਰ ਅੰਦਰੋਂ ਆਣੀ ਸੀ ਉਹ ਹੁਣ ਆ ਨਹੀਂ ਰਹੀ ਉਹ ਕੋਈ ਪ੍ਰੈਕਟਿਸ ਕਰਦਾ ਆਦਮੀ ਵਰਜਿਸ਼ ਕਰਦਾ ਚੱਲਦੇ ਰਹੇ ਛੱਡ ਦਿੰਦੇ ਜਾਮ ਹੋ ਜਾਂਦੇ ਨੇ ਉਹ ਤੁਰਨਾ ਫਿਰਨਾ ਬੰਦ ਕਰ ਜਿਆਦਾ ਵੀ ਕੰਮ ਛੱਡ ਜਬੇ ਹੈ ਨਾ ਕੰਮ ਛੱਡ ਗਿਆ ਬਹਿ ਗਿਆ ਜਿਤ ਕੋਈ ਨਾ ਤੁਰਿਆ ਫਿਰਿਆ ਕਰ ਫਿਰ ਚੱਲਦਾ ਫਿਰਦਾ ਠੀਕ ਹੁੰਦਾ ਚੱਲਦਾ ਫਿਰਦਾ ਤੰਦਰੁਸਤ ਰਹਿੰਦਾ ਹੈ ਵਿਵੇਕ ਹੈ ਜਬ ਵਿਵੇਕ ਤਾਂ ਕਾਬਲ ਹੈ ਵਿਵੇਕ ਉਹ ਰਹਿੰਦਾ ਵਿਵੇਕ ਹੀ ਲੋਗ ਹੈ ਦਾ ਕਾਮ ਪਵਸ ਮਾਦਾਣੀ ਫਿਰ ਇਹ ਕਾਮਨਾ ਨੇ ਮਾਦਾਣੀ ਅੰਦਰੋਂ ਪਾਈ ਹੋਈ ਹੈ ਹੁਣ ਕੀ ਹੋ ਕਿ ਇਹ ਨਾ ਹੋ ਜਵੇ ਕਹਿੰਦੇ ਉਹ ਨਾ ਹੁੰਦੇ ਬਹੁਤ ਤੇ ਚਿੰਤਾ ਮਾਇਆ ਹੈ ਮਾਇਆ ਦੀ ਚਿੰਤਾ ਰੂਤ ਹੋ ਗਈ ਸਭ ਉਲੜੇ ਦੇ ਕੰਬ ਨਾ ਬਗਾਲ ਲੈਣ ਕਿ ਆਪ ਹੋਊਗਾ ਇਹ ਹੋਊਗਾ ਉਹ ਨੇ ਤੇ ਨੇ ਅੰਦਰ ਅੱਥਲਾ ਬਚਾਇਆ ਪਿਆ ਮੁਦਾਰਿਦ ਤਾਂ ਬਚਾ ਲੁੰਦੀ ਹੈ ਚਾ ਚੱਕੀ ਮੰਨਦੇ ਅੱਥਲਾ ਨਹੀਂ ਮਾਂਦਾ ਕਿ ਚੰਗ ਨੇ ਤਰਫਲਾ ਬਜਾਇਆ ਪਿਆ ਤਾਂ ਦੇ ਵਿਚਾਰ ਜਸ ਸੋਚਦਾ ਕਦੇ ਪੁੱਛਾ ਕਰੇ ਸਦਾ ਕਦੇ ਸਦਾ ਕਦੇ ਪੁੱਛਾ ਸੋਚਦਾ ਗਿਆਨਤਾ ਹੋਈ ਸਮੁੰਦਰ ਦੇ ਵਿੱਚ ਜਵਾਰ ਪਾਟ ਆਇਆ ਹੁੰਦਾ ਜਵਾਰ ਪਾਟਾ ਅੰਦਰ ਜਵਾਰ ਪਾਟ ਆਇਆ ਪਿਆ ਬਾਬਾ ਜੀ ਜਿਨ੍ਹਾਂ ਨੇ ਇਹ ਉਮਰ ਹੋ ਗਈ 70 ਸਾਲ ਹੋ ਗਈ ਤਾਂ ਉਹ ਜਵਾਰ ਪੱਟ ਆ ਗਿਆ ਉਹਨਾਂ ਦੇ ਅੰਦਰ ਪਰ ਉਹਨਾਂ ਨੇ ਪਹਿਲਾਂ ਇਹ ਗਿਆਨ ਨਹੀਂ ਲਿਆ ਵੀ ਇਹਨੂੰ ਕੰਟਰੋਲ ਕਿਵੇਂ ਕਰਨਾ ਹੈ ਉਹਨਾਂ ਉਹ ਉਹ ਹੁਣ ਕੀ ਕਰ ਇੱਕ ਇੱਕ ਛੜ ਸਕਦੇ ਉਹ ਉਹ ਕਹਿੰਦਾ ਸਾਹਿਬ ਸਰਵਰ ਜਵ ਉਹ ਉੱਚ ਨਹੀਂ ਹੋ ਸਕਦਾ ਉਹਦੇ ਕੋਈ ਚਾਰਾਜ ਨਹੀਂ ਹੋ ਸਕਦਾ ਹਾਂਜੀ ਤਾਂਤੇ ਬਿਖੈ ਭਈ ਮਤ ਪਾਵਸੀ ਉਹ ਤੇ ਜਿਹੜੀ ਬੇਖਿਆ ਦੀ ਮੰਤ ਵੀ ਪ੍ਰਾਪਤੀ ਹੋਈ ਹੈ ਮਾਇਆ ਵੀ ਮਤ ਆੜੀ ਉਹ ਲੱਗਣਾ ਨੇ ਖੇਲੇ ਆਦਲ ਸੰਗਰ ਦੇ ਗੋਤੇ ਖੰਡਾ ਤਾਂਤੇ ਬਿਖੈ ਭਈ ਮਤ ਪਾਵਸੀ ਜਦੋਂ ਦੇ ਪ੍ਰਾਪਤੀ ਵਿਵੇਕ ਬਾਤ ਦੀ ਪ੍ਰਾਪਤੀ ਹੁੰਦੀ ਹੈ ਤੇ ਹੋਰ ਕੀ ਹੋਣਾ ਹੈ ਵਿਸ਼ੇਵਕਾਰਾਂ ਦੀ ਮਤ ਇਹ ਪ੍ਰਾਪਤ ਉਹਦੇ ਕੋਲ ਹੁੰਦੀ ਨਹੀਂ ਆ ਵਿਸ਼ ਵਵੇਕ ਵਾਲੀ ਬੁੱਧ ਨਹੀਂ ਹੁੰਦੀ ਮਤਲਬ ਵਿਵੇਕ ਕਾਰਾਂ ਦੀ ਮਤ ਤੋਂ ਦੀਆ ਬਵੇਕ ਦੀ ਮਤ ਨਹੀਂ ਹੁੰਦੀ ਇਹਦੀ ਉਹ ਹੈ ਇਹ ਖਗੋਦੋ ਆਹੀ ਪ੍ਰਾਪਤੀ ਹੋਈ ਐ ਜਿਹੜਾ ਕੰਮ ਕੀਤਾ ਜਿੰਦਗੀ 'ਚ ਉਹਨਾਂ ਨੂੰ ਆਪ ਪ੍ਰਾਪਤੀ ਹੁੰਦੀ ਐ ਬਿਖੇ ਭਈ ਵਕ ਪਾਵੋ ਪਾਵਦ ਪੌੜੀ ਪ੍ਰਾਪਤੀ ਕਰ ਲਈ ਬਿਖੇ ਦੀ ਕਮਲ ਕੁਮਲਾਣਾ ਕਾਇਆ ਕਮਲ ਕੁਮਲਾ ਗਿਆ ਸੁੱਕ ਗਏ ਕਮਲਾਏ ਉਹ ਮਨ ਦੇ ਵਿੱਚ ਕੁਮਲਾ ਗਿਆ ਵੀ ਹੁਣ ਵੀ ਕੁਝ ਹੋ ਸਕਦਾ ਬਿਆਸ ਹੋ ਗਈ ਉਸ ਤੋਂ ਦਾ ਹੀ ਰਾਜਰ ਨੂੰ ਗਿਆ ਹੁਣ ਦੀ ਪਥੋ ਤਪਦਾ। ਤਾਂ ਦਸਵਾ ਹੀ ਵੀ ਕੁਝ। ਉਹ ਤੇ ਵੀ ਪਸਤਾਨੀ ਦਾ ਬੋਲਿਆ। ਜੀ। ਬੋਲਣੇ ਤੋਂ ਬਾਅਦ ਨਾ ਦਾ। ਉਹੀ ਪਾਗਸ। ਉਹੀ ਆ ਗਿਆ ਤਾਂ ਉਹੀ ਹੋ ਗਿਆ। ਉਹ ਹੋ ਗਿਆ ਜੋ ਕਿਹਾ ਸੀ। ਜੀ ਦਾ ਹੋਇਆ ਉਹਨੂੰ ਤਾਂ ਪਤਾ ਹੈ। ਦੂਜੇ ਨੂੰ ਪਤਾ ਲੱਗ ਜੂ। यदि वता होगी वो कहे कि दई मेरा नहीं हुआ ये हुदा नहीं किसे ने जवाब देता भी गलत करदा है मेरा नहीं हुआ ये है कहा ਨਾਲ यही हुंदी है हां जी अवगति बाण छोड़ मृत ਗਰ ਤਮਨਨ ਛੱਡਤਾ ਉਹ ਮਾਤੰਗਵਾ ਪੰਜ ਗਿਆਨ ਅੰਦਰੇ ਛੱਡਤੇ ਪੰਜ ਗਿਆਨ ਅੰਦਰੇ ਛੁੱਟ ਕੇ ਜਾਂ ਤੇਰੀ ਗੁੱਡੀ ਉਹ ਛੁੱਟ ਗਈ ਬਸ ਸੰਸਾਰ ਛੁੱਟ ਗਿਆ ਫਿਰ ਇਹ ਚਾਹੇ ਤਾਂ ਉਹ ਨਈ ਬੇਉਚੀ ਹਾਲਤ ਵਿੱਚ ਚਲੇ ਗਿਆ ਆਪਾਂ ਕਹਿੰਦੇ ਸੁਤ ਬਾਣੀ ਜੀ ਜੀ ਕੋਬੇ ਦੇ ਜੱਜ ਹੁਦਾਇ ਬਸ ਤਵਨ ਨਾ ਛੋਟ ਗਿਆ ਸੰਹਾਰ ਦਾ ਸੰਪਰਕ ਟੁੱਟ ਗਿਆ ਬਸ ਅਵਗਤੀ ਬਾਣੀ ਤੋ ਪਾਛੈ ਪਛਤਾਣਾ ਪਪਿਛੇ ਪਰ ਤਰੁਈ ਬੰਦੇ ਤੇ ਜਾ ਕੇ ਸਰਗੁਨਾਤ ਜਾ ਲੇਖਾ ਬੋ ਗੂ ਉਹ ਚੌਲ ਰਹੀ ਕੀ ਹੈ ਵਰਤਮਨ ਦਲ ਦੇ ਵਿੱਚ ਹੀ ਤੇਰਾ ਸੰਸਾਰ ਹੈ ਉਹ ਜਵਾਕ ਨੇ ਮੁੰਡੇ ਨੇ ਪ੍ਰਾਪਰਟੀ ਇਹ ਵਰਤਮਨ ਦੇ ਵਿੱਚ ਹੈ ਨਾ ਇਹਦਾ ਹੌਸਲਿਆਂ ਨੇ ਖੜਿਆ ਛੱਡਣ ਦਾ ਖਿਆਲ ਆਉਂਦਾ ਫਿਰ ਕੋਈ ਅਵਗਤੀ ਬਣ ਮੰਡਲ ਅਵਗਤ ਬਣ ਅਵਗਤੀ ਇਹ ਗਤੀ ਫੋੜੀ ਪੁੱਠੀ ਮੱਤ ਹੈ ਉਹ ਕਰ ਪਾ ਸਕਦੇ ਜੀ ਲਿਆ ਜੀ ਗਤੀ ਗਤੀ ਤਾਂ ਗਤੀ ਹੋਣੀ ਹੈ ਜਾਣਾ ਤਾਂ ਗਤੀਸ਼ੀਲ ਹੋਣਾ ਸੀ ਬੁੱਧ ਬੁੱਧੀ ਰਾਹਾਂ ਦੇ ਨਾਲਸ ਆਪ ਗਤੀ ਹੈ ਜੀ ਸੋ ਗਿਆ ਜੋ ਪੂਜੀ ਲੈ ਗਿਆ ਸਿੱਤ ਉਹ ਗਈ ਜੋ ਘੱਲ ਲੈ ਕੇ ਸੀ ਉਹ ਵੀ ਅੱਜ ਛੱਡ ਕੇ ਚਲਾ ਗਿਆ ਜੋ ਖਟਿਆ ਸੀ ਉਹ ਸਦਾਰਾ ਗਿਆ ਸਾਕੇ ਛੱਡ ਦੇਵ ਦੇ ਖਰੀਦ ਲਿਆ ਪਰ ਪੰਜ ਅਦੰਬਰ ਚ ਪਹੇਜਿਆ ਅਦੰਬਰਾ ਚਲਿਆ ਗੈੜੀ ਕਰਕੇ ਦੀਵ ਖਦਾਈ ਉੱਪਰ ਬੰ덤 ਛਾਏ ਇਧਰ ਚੜਾ ਗਿਆ ਸੰਤ ਵੀ ਉਹਲੇ ਨੇ ਪਛਤਾਉਦੇ ਨੇ ਜਿਹੜੇ ਕੁਛ ਕਰਦੇ ਨੇ ਉਹ ਵੀ ਪਛਤਾਉਦੇ ਨੇ ਉਹ ਵੀ ਇਹੀ ਹੁੰਦਾ ਵੀ ਮੇਰੇ ਪਿੱਛੇ ਕੋਈ ਬੱਲਾ ਸੰਤ ਗਿਆ ਬਣਾਇਆ ਉਹ ਬਣਾਇਆ ਆਏ ਕੁਝ ਆ ਹੋਰ ਕੁਝ ਨਹੀਂ ਮੇਰਾ ਨਾ ਹੋਊ ਕੁਝ ਆਈਏ ਹੋਰ ਕੁਛ ਨਹੀਂ ਉਹਨਾਂ ਦੇ ਪੱਲੇ ਹੁੰਦਾ ਬਚਤ ਦੇ ਉਹ ਵੀ ਉਹ ਬ੍ਰੇਤ ਵਰ ਕੇ ਰਹਿੰਦੇ ਉੱਥੇ ਜਿਵੇਂ ਬੁੱਧ ਜੀ ਵਿੱਚ ਸਿਰਨ ਲਗੇ ਅੰਤਕਾਰ ਜੇ ਕਹਿੰਦੇ ਸੁੱਖਾ ਪੂਰੀ ਹੁੰਦੀ ਪ੍ਰੇਤ ਹੁੰਦੇ ਨੇ ਫਿਰ ਉੱਥੇ ਉਹ ਸੁੱਖਾ ਪੂਰੀ ਪ੍ਰੇਤ ਉਹ ਜਿਹਨਾਂ ਹੋ ਜੁੜੀ ਕੀਓ ਪ੍ਰੇਤ ਇਹਨਾਂ ਬੁੱਧ ਰਾਜਨ ਨਾਲ ਜੁੜੇ ਹਾਂਜੀ ਬਬਈ ਅਵਗਤ ਬਾਣ ਛੋੜ ਅਵਗਤ ਬਾਣ ਛੋੜ ਓਹੋ ਵਿਰਤ ਬੰਨਣ ਛੁੱਟ ਗਿਆ ਅਵਗਤ ਛੁੱਟੀ ਵੀ ਜਦੋਂ ਜਲਦਾ ਸੀ ਪੁੱਠੇ ਪਾਸੇ ਉਹ ਵੀ ਛੁੱਟ ਗਿਆ ਤੇ ਵਿਰਤ ਬੰਨਣ ਛੁੱਟ ਗਿਆ ਉਹ ਪੁੱਠਾ ਸਬਰ ਵੀ ਹੁਣ ਬੰਦ ਹੋ ਗਿਆ ਅਵਗਤ ਆਲੀ ਬਾਣੀ ਪੁੱਠੀ ਪਤ ਉਹ ਵੀ ਛੁੱਟ ਗਈ ਪੇੜੀ ਪਤ ਨਹੀਂ ਸੀ ਉਹ ਵੀ ਛੁੱਟ ਗਈ ਸਾਡ ਛੱਡ ਗਈ ਪਹਿਲਾਂ ਆਇਆ ਨਹੀਂ ਵਿਰਤ ਬੰਨਣ तरुण ਤੇਜ परत्रिय ਮੁਖ ਜੋ ओ जण छड़या अफगन बाण छोड़ मृत मंडल तो पाछै पछताना वृद्ध मंडल भी छुट गया पुठा चल लो भी छुट गया मुखी पत्थ भी इथी रहगी नाल नहीं गई कहंदा वतवारा सबै बुद्धि जा जीव दिख रहत तत् ज्ञान तत् ज्ञान नाल ਨਾਲੀ ਜਾਂਦੀ ਏ ਇਹ ਵੀ ਛੁੱਟ ਗਈ ਜੇ ਇੱਕ ਗੱਲ ਕਰਦਾ ਤਾਂ ਇੱਥੇ ਰਹੀ ਹੋਂ ਤਾਂ ਹਮੀ ਪਹਤਾਨ ਨੂੰ ਕੋਈ ਜੇ ਲੋਕਾਂ ਨੂੰ ਸਿਖਾ ਦਿੰਦਾ ਸੀ ਇੱਥੇ ਉਹ ਵੀ ਇੱਥੇ ਰਹੀ ਉਹ ਵੀ ਛੁੱਟ ਗਈ ਉਹ ਵੀ ਸ਼ਰੀਰ ਦਾ ਨਾਲੇ ਸੀ ਕਾਂ ਕੌਣ ਪਹਤਾਨੂ ਕਾਂ ਦਾ ਮੁੱਲ ਜਮ ਦਾ ਵੱਡਾ ਹੋਇਆ ਦੁਨੀਆ ਦਾ ਗਣ ਸੰਭਣ ਉਹ ਹੈ ਅਗੇ ਕਰ ਲਈ ਕੀ ਇਰਦਵਾਚੀ ਹੈ ਬੈ ਲਿਖਾ ਕਰ ਸਮਝਾਇਆ ਫੌਲਾ ਹੋ ਗਈ ਪੌਂਦੀ ਹੁਣ ਸੁਣੀਏ ਕਿਆ ਰੁਆਇਆ ਬਲ ਅੰਦੇ ਜਗ ਬੁਕਾਇਆ ਨਿਕੁਟੀ ਤੁਨ ਉਪਜੈ ਨਿਕੁਟੀ ਨੰਨੇ ਨੂੰ ਸਿਆਰੀ ਅੰਡ ਹੋ ਗਈ ਦੇਈ ਗੁਪਤ ਸੀ ਜੜੀ ਕੱਲੀ ਰਹਿ ਗਈ ਦੇ ਹੋ ਗਈ ਤੇ ਛੁੱਟ ਗਈ ਕੋਈ ਸਰੀਰ ਨਹੀਂ ਰਿਹਾ ਉਹਦੇ ਨਾਲ ਕੁਟੀ ਹੁੰਦੀ ਐ ਨ ਕੁਟੀ ਜੀ ਤੇ ਕੁਟੀ ਜੋ ਬਾਹਰ ਹੋ ਗਈ ਬੀ ਕੁਟੀ ਹੋ ਗਈ ਉਹ ਤਿਰਕੁਟੀ ਜਉਂਦੀ ਐ ਨਾ ਇਹਦਾ ਨਵਾਸ ਤੇ ਤਿਰਕੁਟੀ ਖਿੱਚ ਕੇ ਬਾਹਰ ਕਾੜਤੀ ਬੀ ਕੁਟੀ ਨਿਕੁਟੀ ਦੇਖ ਤੁਨ ਉਪਜੈ ਦੇਹ ਨਿਕਲ ਗਈ ਬਾਹਰ ਕਾੜੀ ਖਿੱਚ ਕੇ ਇਹਦੇ ਲਈ ਤਨਾਇਦਾ ਕੱਟੇਦੁngਲ ਦਾਦੀ ਬਾਹਰ ਕੱਢੀ ਗਾ ਲੈ ਬਾਹਰ ਕਾੜ ਲੈ ਫੇਰ ਤੋਂ ਉਭਜੇ ਫੇਟਾ ਵਜੀਐ ਫੇਰ ਜਿਆਵੀ ਐ ਕੀ ਹੋਇਆ ਜੈਨੂ ਗਵਾਇਆ ਦੀ ਗੱਲ ਸਮਝ ਆਈ ਆ ਫੇਰ ਨਿਕਲਿਆ ਤਾਂ ਅੰਦਰੋਂ ਫੇਰੋਂਦਾ ਕੋਸਦਾ ਮਾਨ ਕਰਤ ਨਹੀਂ ਬੁੱਝੈ ਕੋਲ ਕਰਦਾ ਹੁਰ ਨਹੀਂ ਸਮਝ ਲਗਾ ਲੈ ਜਿੰਨਾ ਜਨ ਕਰਦਾ ਇਹ ਗੱਲ ਨਹੀਂ ਬੁੱਝਦਾ ਵੀ ਐ ਹੋਊਗਾ ਐ ਹੁੰਦਾ ਔਰ ਹੰਕਾਰ ਇਦਦਰੂ ਸੋਚਣੇ ਗੁੱਜਣੇ ਨਹੀਂ ਦਿੰਦਾ ਇਦਦਰ ਵਿਚਾਰ ਨਹੀਂ ਦਿੰਦਾ ਹੰਕਾਰ ਇਹ ਕਰਦਾ ਇਦਦਰ ਦਾ ਫੱਖ ਜੇ ਨਾਲ ਜੇ ਹੰਕਾਰ ਚਾਹ ਇਦਦਰ ਦਾ ਫੱਖ ਬਚਾਰਦਾ ਹੀ ਨਹੀਂ ਦੇਖੇ ਕਹਿ ਉਹਨਾਂ ਲਾਲਤਿ ਤਰੈ ਜੀਵਨ ਪਦਕਾਰਨ ਲੋਚਨ ਕਛੂ ਨ ਸੂਜੈ ਆਹ ਬਾਤ ਜਿਵੇਂ ਲਾਲਚ ਕਹਿੰਦਾ ਪੈਣਾ ਤਾਂ ਬਰ ਲਈ ਦੀ ਮਨਨ ਤਾਂ ਬਰੋ ਬਸਾਰਿਆ ਹੈ ਬਚਾਉ ਦਾ ਚਤੁਰਤਾ ਦਾ ਰੰਗ ਹੈ ਬਹੁਤ ਬੁੱਧੀ ਦੇ ਵਿੱਚ ਕੋਈ ਸੋਝੀ ਨਹੀਂ ਆ ਰਹੀ ਉਹ ਇਹ ਤਾਂ ਸਜੀ ਚੱਲ ਰਹੀ ਪੜਨਾ ਮਾਰ ਰਾਂ ਤਬ ਹੈ ਮੰਨਦਾ ਬਚਾਉ ਦਾ ਨਹੀਂ ਪਤਾ ਜਿੰਨੇ ਸਾਹ ਗੜ ਵੀ ਨੂੰ ਨਹੀਂ ਵੀ ਮੰਨਦਾ ਫੇਰ ਵੀ ਲਾਲ ਕਰਦਾ ਜੋੜਨਾ ਲੋਚਨ ਕਛੂ ਨਾ ਸੁਝੇ ਅਲੋਜਨ ਉਹਨਾਂ ਦੀ ਅੱਖ ਹੈ ਬੇਕਬੁੱਦਿਨ ਦੇ ਤੋਜੀ ਨਹੀਂ ਬਚਾਰਦਾਰੀ ਗੱਲ ਨੂੰ ਇਹ ਪੋਸੀਬਲ ਨਹੀਂ ਹੈ ਜਿੰਨਾ ਤੂੰ ਚਾਹੇ ਜਿੰਦਾ ਰਹੇ ਮੌਤ ਦੀ ਕੋਈ ਦਵਾਈ ਨਹੀਂ ਹੈ ਬਿਮਾਰੀ ਨਹੀਂ ਹੈ ਕੋ ਦਾ ਕੋਈ ਇਲਾਜ ਨਹੀਂ ਇਹ ਸਮਝ ਨਹੀਂ ਹੈ ਫਿਰ ਮੈਂ ਪਦ ਦਾ ਇਲਾਜ ਕਰੀ ਜੰਦ ਮੈਨੂੰ ਉਚਾਲੋ ਮੈਨੂੰ ਬਚਾਲੋ ਰਾਤ ਨੂੰ ਕਹੀ ਸੀ ਠਾਕਾ ਤੇਜ ਉੱਡਿਆ ਮਨ ਪੰਖੀ ਅਤੇ ਝਾਗਿਆ ਮਨ ਗੁਣੀ ਛੱਡ ਗਿਆ ਬੈਠੀ ਖਤ ਹੋ ਗਈ ਬੈਠੀ ਖਤ ਹੋ ਗਈ ਬਾਹ ਤ੍ਰਿਗੁਣੀ ਛੱਡ ਗਿਆ ਉੱਥੇ ਤੱਕ ਬੰਦੀ ਉਪਣ ਦੀ ਬਾਹ ਹੋਣਾ ਕੋ ਜਾ ਸੌ ਘੋਤੇ ਹੋ ਗਿਆ ਜਿਹੜਾ ਅਕਲ ਦਾ ਕੋ ਸੀ ਨਾ ਦਿਮਾਗ ਅਗਲ ਦਾ ਕੁਝ ਜਨਮ ਆਵ ਜੀ ਸਭ ਉਹਦੇ ਹੋ ਗਏ ਉੱਥੇ ਹੱਥ ਵੀ ਉਪੜ ਗਾ ਇਹ ਥੱਕ ਗਿਆ ਅਗਲੇ ਕੁਝ ਦੀ ਆਥਰੀ ਅਗਲ ਕਭ ਗਲਦੇ ਹਟ ਗਈ ਤੇ ਕੁਝ ਦੇ ਹੱਥੇ ਵੀ ਬੋਲਦਾ ਤਾਂ ਅਗਲ ਕਭੀ ਦੀ ਕਰਦੀ ਅੱਜ ਫਰੀਦ ਦੇ ਘਰ ਆਂਗਨ ਨਾ ਸੁਖਾਈ ਆਹ ਅੰਗਣ ਦੇ ਵਿੱਚ ਸੁੱਖ ਨਹੀਂ ਲਿਆ ਹੁਣ ਸਾਦੇ ਵੀ ਪਟਪੜੂਆ ਪੈ ਗਿਆ ਬੇੜੇ ਵਿੱਚ ਵੀ ਲੋਕ ਤੇਰਕੁੜੀ ਅੱਖਰਾਂ ਦੀ ਪਲਕ ਵੀ ਖੜ ਗਈ ਬੋਲਣ ਤੇ ਬੰਦ ਹੋ ਗਈ ਗਲਾ ਖੜ ਗਿਆ ਤੇਰਕੁੜੀ ਛੁੱਟ ਗਈ ਆਦਿ ਤਦ ਸੁੱਖ ਕਿੱਥੇ ਰੜ ਮਤੇ ਬਲਾਵਸਿਰ ਹੋ ਗਿਆ ਦੇਣੀ ਕਹੈ ਸੁਨੋ ਭਗਤੋ ਮਰਨ ਮੁਕਤ ਕਿ ਨ ਪਾਈ ਵੈੜੀ ਕਹਣਾ ਤੁਣ ਹੋਦੇ ਭਗਤੋ ਇਹ ਕਹਿੰਦੇ ਨੇ ਮਰੇ ਤੇ ਮੁਕਤੀ ਬੜਾ ਜਲਦੀ ਆ ਇੱਕ ਬੰਦਾ ਦਾ ਵਜੂ ਦੱਸੋ ਗਈ ਇਹਨੇ ਕੇ ਮੁਕਤੀ ਪਾਈ ਬੰਦੇ ਮਰੇ ਦੱਸੋ ਕੀ ਸੂਤ ਆ ਉਹਦਾ ਮੁਕਤੀ ਦਾ ਕਹਿੰਦਾ ਬਤਵਾ ਮੁਕਤੀ ਉਹਦੇ ਜਲਦੀ ਹੁੰਦੇ ਨੇ ਜਿੰਨਾ ਜਿਵੇਂ ਜਿਹੜਾ ਕੁਝ ਕਰ ਲੈਣਾ ਮੁਕਤੀ ਵਾਸਤੇ ਉਹੀ ਮੁਕਤ ਹੋਵੇ ਲਈ ਤਾਂ ਆਹ ਹਾਲ ਸਭ ਦੀ ਹੁੰਦੀ ਹੈ ਸਭ ਦੀ ਇਹ ਹਾਲ ਤੋਂ ਦੇ ਕੱਢਾਈ ਸਭ ਤੋਂ ਹੋਵੇ